जेबा एक सुप्त अजेग सतपुरुष पूर्ण विवेक जेबा एक उस्ता ने तो जीवात्मा का एक हर हर आज भी बोले का जी भी कहिया था थाती दोस्तों जोद में एक बारे एक कर्ण खड़े एक कर्ण कीन सूर्य बारे सुकर्ण की दासुगी सूर्य ने करना के नहीं ਬਿਲਹਿੰ ਪੱਲੇ ਪਾਸੇ ਕਰਨ ਪੈਂਦੀ ਇਧਰ ਦੇ ਪਾਸੇ ਵਾਲੇ ਨੂੰ ਪਤਾ ਹੀ ਨਹੀਂ ਬਿਲਹਿੰ ਪੱਲੇ ਪਾਸੇ ਕੀ ਆ ਉਹ ਤਾਂ ਇੱਕ ਪਾਸੇ ਜਾਣਦੀ ਹੈ ਕਹਿੰਦਾ ਸਿੱਖੀ ਚ ਪੈਦਾ ਹੋਇਆ ਉਹਨੂੰ ਕੀ ਪਤਾ ਵਰਮਾ ਜੀ ਕੀ ਹੈ ਉਹ ਸਦਾ ਕੋਈ ਦਸ ਪਾਸਾ ਨਹੀਂ ਦੱਸਿਆ ਆਪਣੇ ਘਰ ਦੱਸਿਆ ਬਾਕੀ ਦੁਨੀਆਂ ਦੇ ਖਾਤਮ ਦੱਸੇ ਨਾ ਤੇ ਜੇ ਪਿਛਲਾ ਵੀ ਤਾਂ ਸੇ ਆਪਣਾ ਹੀ ਤਾਂ ਸੇ ਉਹ ਤਾਂ ਕਹਦਾ ਸੀ ਦੱਸੇ ਤੇ ਇਹ ਕੀ ਜੇ ਪਾਇਆ ਆਪਣੀਆਂ ਜਾਨ ਦਿੱਤੀ ਆ ਪੈਸੇ ਜਾਨਵਰ ਦੀ ਥੋੜੀ ਜੀ ਹੱਕੇ ਨਹੀਂ ਦਿੱਤੀ ਕਾ ਮਾਫੀ ਤਾਂ ਨਹੀਂ ਦਿੱਤੀ ਲੋੜ ਹੈ ਜਦ ਤੱਕ ਸੰਸਰ ਨਹੀਂ ਰੋਕੀ ਜਦੜੇ ਬੋਲਣਾ ਤਾਂ ਹੋਰ ਕੁਛ ਹੈ ਤੇ ਹੋਰ ਕੁਛ ਕਹਤਾ ਜਦੜੇ ਬਾਝੂ ਨਹੀਂ ਦੱਲ ਜਿੰਨਾ ਅਸੀਂ ਉਹਦੇ ਬਿਆਨ ਦੇਣਾ ਹੋਣਾ ਨਾ ਜੱਲਾ ਬਾਝੂਗਾ ਜਿੰਨਾ ਬਿਆਨ ਲੰਬਾ ਹੋਣਾ ਨਾ ਕੋਰਟ 'ਚ ਉਹਨੇ ਸਵਾਲ ਜਿੱਤੇ ਜਲਦ ਖੁੱਲਦੇ ਨਾਲ ਉਹਨਾ ਬ੍ਰੋਦੀ ਤੇ ਨਾਲੇ ਜਿਆਦਾ ਸਵਾਲ ਕੱਢਦਾ ਚਿੱਟਲੀ ਭਾਈਆਂ ਛੋਟ ਬਿਆਨ ਦੇਈ ਦਿੰਦੇ ਜਿੱਦੋਂ ਕਰ ਤੋ ਕਰ ਸਵਾਲ ਉਪਰ ਹਾਂ ਜਿਹੜਾ ਇੱਕ ਉਸਤ ਅਦੇਖ ਉਹਦੇ ਵਿੱਚੋਂ ਕੋਸ਼ਿਸ਼ ਕੀਤੀ ਇਹਨਾਂ ਨੂੰ ਸਵਾਲ ਜਦੋਂ ਉਹਨਾਂ ਨੇ ਲਿਖਿਆ ਉਹ ਚੋਂ ਵੀ ਕਰਨ ਦੀ ਕੋਸ਼ਿਸ਼ ਕੀਤੀ ਛੋਟਾ ਜਿਹਾ ਵਿੱਚੋਂ ਵੀ ਉਹ ਗੱਲ ਆ ਬੁੱਧੀ ਹੈ ਜਿਆ ਉਹਨਾਂ ਨੂੰ ਗੱਲ ਨਹੀਂ ਉਹਨਾਂ ਨੂੰ ਕੀ ਪਤਾ ਵਿਚਾਰਿਆ ਨੂੰ ਧਰਮ ਕੀ ਹੁੰਦਾ ਹਾਂ ਨੰਦ ਗਦਾਂ ਸਾਰੇ ਇਹ ਨੰਦ ਗਦਾਂ ਕਰਦੇ ਰਹਿੰਦੇ ਹੁੰਦੇ ਹਾਂ ਸਤਿ ਕੋਸ਼ ਪੂਰਨ ਵਿਵੇਕ ਜੀਵਾ ਇੱਕ ਉਸਤਤ ਅੰਵੇਕ ਉਸਤਤਤਾ ਹੈ ਅਤੇ ਇੱਕ ਪ੍ਰਕਾਰ ਦੀ ਸਾਡੇ ਕੋਲਤੀ ਹੈ ਜੀ ਥੋੜੀ ਜਿਹੀ ਕਕ ਕਲਾ ਸਾਡੇ ਕੋਲ ਸਤਪੁਰਖ ਕੋਈ ਸਤਪੁਰਖਾ ਪੂਰਨ ਬਵੇਕ ਹੈ ਪੂਰਾ ਬਵੇਕ ਸਭ ਤੇ ਕੋਈ ਪੂਰੇ ਬਵੇਕ ਨੇ ਸਾਰੀ ਸ੍ਰਿਸ਼ਟੀ ਵੀ ਰਚੂ ਰਹੀ ਸਾਨੂੰ ਸਾਰੀ ਸਿੱਧੀ ਰਜਮਾਰੀ ਕੋਈ ਜਾਣੀ ਹੋਰ ਬੇਗੂਰਾ ਸੱਚਖੰਡ ਹੈ ਪੂਰੇ ਸੱਚਖੰਡ ਤੇ ਪਾਰਲੀਮੈਂਟ ਸੋਲਪੂਰਨ ਹੋਵੇਗਾ ਇੱਕ ਕੋੜ ਨਹੀਂ ਹੈ ਉੱਥੇ ਸਾਰਿਆਂ ਕੋਲੇ ਇੱਥੇ ਇਕੱਲਾ ਉੱਥੇ ਤਾਂ ਇੱਕ ਦੂਰੇ ਨਾਲ ਸਵਾਲ ਵੀ ਕਰਦਾ ਹਨ ਕੁਝ ਮਿਲਦਾ ਨਹੀਂ ਸਤਪੁਰਖ ਪੂਰਨ ਬਿਵੇਕ ਹਾਂ ਕਾਹੂ ਬੋਲਣਾ ਪੌਂਛਤ ਪੁਰਾਣੀ ਅਗੰਮ ਅਗੋਚਰ ਪ੍ਰਭ ਨਿਰਵਾਣੀ ਬਹੁਤ ਖਤਰਨਾਕ ਗੱਲ ਹੈ ਬਹੁਤ ਖਤਰਨਾਕ ਗੱਲ ਹੈ ਕਾਹੂ ਬੋਲੂ ਨਾ ਜੋ ਮਰਜੀ ਬੋਲੀ ਜਾਓ ਵੈਗੁਰਵ ਵੋਲੀਓ ਰਾਮ ਰਾਮ ਬੋਲੀਓ ਅੱਲਾ ਅੱਲਾ ਬੋਲੀਓ ਨਹੀਂ ਬੋਲ ਸਕਦਾ ਉੱਥੇ ਕਿਸੇ ਕੁਝ ਵੀ ਬੋਲ ਕੇ ਨਹੀਂ ਬੋਲ ਸਕਦਾ ਜੋ ਮਰਜੀ ਕਰੀ ਜਾਓ ਨਹੀਂ ਕੋਈ ਕਹਿੰਦਾ ਐਸੀ ਗੱਲ ਕਹਿ ਗੋਲ ਬੋਲ ਸਭ ਖਤਮ ਕਰਤਾ ਲੱਗਦਾ ਇੱਥੇ ਕਿੱਥੋਂ ਜਾਵਾਂ ਵੇ ਵੇ ਬਚੋ ਬਚੋ ਤਲਵਾਰ ਸਾਰਿਆਂ ਤੇ ਇੱਕੋ ਹੀ ਫੇਰਦੀ ਜਦ ਇੱਕ ਰਹੀ ਤੰਦ ਆਰ ਕੋਸ ਹਰ ਰਹਿਮਸ ਤੇਰੇ ਆ ਵਾਰ ਕੀਤਾ ਹੈ ਕੀ ਹਿਤੂ ਕੀ ਮੁਸਲਮਾਨ ਕੀ ਈਸਾਈ ਸਾਰੀਆਂ ਪੱਤਾਂ ਦੇ ਇੱਕ ਵਾਰ ਜੇ ਵੱਢ ਕੇ ਪਰੇ ਬਗਾਈ ਦੁਰਗਸਾ ਵੱਡ ਸੁਮਨ ਬਹੀ ਕ ਕੋ ਰੜਦੀ ਜਾਗੇ ਤਖਤ ਕੋ ਵੱਡ ਪਾਖੜ ਵੱਢ ਕੇ ਉਗਲ ਲੈ ਕਹੋ ਬੋਲ ਨਾ ਪਹੁੰਚ ਪ੍ਰਾਨੀ ਕੁਛ ਵੀ ਬੋਲ ਲੈ ਕੋਈ ਮੰਤਰ ਪੜ ਲੈ ਕੁਛ ਵੀ ਉਚਾਰਨ ਕਰ ਲੈ ਗ੍ਰੀਪਾਲ ਸਕਦਾ ਨਾ ਪਹੁੰਚ ਪ੍ਰਾਨੀ ਕਿਉਂ ਅਗਾਮ ਗੋਚਰ ਪ੍ਰਭ ਨਿਰਵਾਣੀ ਪ੍ਰਭ ਨਿਰਵਾਣੀ ਦਾ ਤੇਰੀ ਬੁੱਧੀ ਤੋਂ ਭਰੇ ਹੈ ਤੇਰੀ ਪਹੁੰਚ ਤੋਂ ਹੀ ਭਰੇ ਹੈ ਤੂੰ ਕਿਵੇਂ ਪਹੁੰਚੀ ਹੋ ਜੀ ਅਗਾਮ ਗੋਚਰ ਪ੍ਰਭ ਨਿਰਵਾਣੀ ਪਹਿਲੀ ਪੰਕਤੀ ਕੀ ਸੀ ਇਹ ਤਾਂ ਪਹਿਲੀ ਵਕਤੀ ਕੀ ਸੀ ਜੇਪਾ ਇੱਕ ਉਸਤ ਅਨੇਕ ਸਤ ਪੁਰਖ ਪੂਰਨ ਵਿਵੇਹ ਇਹ ਤਾਂ ਪਹਿਲੀ ਕਿਥੇ ਖਤਮ ਹੋਈ ਸੀ ਨਾਨਪਾਵੇ ਤਸਰੇ ਮਲਾਏ ਉਥੋ ਝੱਕੋ ਜਿਸ ਭਾਵੇ ਤਸਰੇ ਮਲਾਏ ਅਸੀਂ ਜਾਣੇ ਆ ਆਪਣੀ ਮਰਜ਼ੀ ਨਾਲ ਵੈਗੂ ਗਰੂ ਕਰਕੇ ਪਹੁੰਚ ਅੱਜ ਐਂਟਰੀ ਲੈ ਲਾਂਗੇ ਬਗਬਗੂ करके, ਕਿ ਇਸ ਗੱਲ ਦਾ ਵਿਰੋਧ ਹੈ ਜਿਸ ਭਾਵੇਂ ਤੁਸੀਂ ਲੇਬ ਲਾ ਦਿਓ ਬਹੁਤ ਖਤਰਨਾਕ ਹੈ ਸੁਣੇ ਜਾਏ ਦੀ ਸੋਖੀ ਜੀ ਸੁਣੇ ਜਾਓ ਇਹ ਤਾਂ ਟੱਕਰ ਲੱਗਦਾ ਸੀ ਇੱਕ ਲਫ਼ਜ਼ ਬਦਲ ਦੇ ਰੱਖ ਦਿੰਦਾ ਇੱਕ ਸ਼ਬਦ ਬਦਲ ਦਿੰਦਾ ਔਰ ਅਸਤਰਾਂ ਬੈਲੂੜੇ ਤੋਂ ਉਹਨੇ ਸਰਦੋਖਣਾਂ ਦਾ ਕਿੰਨਾ ਕਹੁੰਦੇ ਨੇ ਕਿਉਂ ਬੋਲਦੇ ਸੀ ਉਹ ਤਾਂ ਕਹਿੰਦੇ ਪਹੁੰਚ ਨਹੀਂ ਸਕਦਾ ਪਹੁੰਚਣਾ ਉਹਨਾਂ ਨੇ ਵੀ ਇਹ ਨਾ ਪਹੁੰਚਣ ਦੇਣੇ ਕਿਹੜ ਨੂੰ ਤੇ ਉਹ ਤੁਹਾਡੇ ਦੇ ਬੰਦੇ ਹੀ ਦੀ ਪਹੁੰਚਣਾ ਆ ਵਾਲੇ ਦੇ ਇਹਦਾ ਦੂਹੇ ਤੁਹਾਡੇ ਦੇ ਬੰਦੇ ਨੇ ਸਾਰੇ ਹੀ ਇਹ ਸਾਰੇ ਹੀ ਸ੍ਰੀ ਚੰਦਰ ਲਖਮਣ ਚੰਦ ਆ ਜਿਹੜੇ ਦੂਏ ਤੇ ਬੀੜੇ ਦੇ ਉਹ ਧੜੇ ਦੇ ਬੰਤੇ ਨੇ ਸਾਰੇ ਹੀ ਤਾਂ ਵਰਮਤੇ ਖਿਲਾਫ ਖੜੇ ਨੇ ਫਿਰ ਬੋਲਦੇ ਨੇ ਹਰਦੇ ਇਹ ਤੋਂ ਪਤਾ ਲੱਗਦਾ ਗੁਰੂ ਵਾਲੇ ਕੌਣ ਨੇ ਤੇ ਜਿਨ੍ਹਾਂ ਨੂੰ ਕਿਹਾ ਸੀ ਨਾ ਕਿ ਖਾਲਸੇ ਨੇ ਨਹੀਂ ਵਰਤਣਾ ਲੇਕਰ ਹਾਂ ਧੀਰਮੱਲੀਆ ਨਾਲ ਰਾਮ ਰਈਆ ਨਾਲ ਮੇੜਿਆ ਨਾਲ ਵਸੂਦਾ ਨਾਲ ਉਹ ਸਾਰਾ ਹੀ ਕੋਡਮਾ ਇਹ ਹੈ ਹਾਬੀ ਸਿੱਟੀ ਦੇ ਕੁਰਬਾਨੀ ਦਾ ਪ੍ਰਚਾਰ ਆਪੇ ਇਹਦਾ ਪ੍ਰਚਾਰ ਕਿਉਂ ਕੀਤਾ ਇਹਨਾਂ ਨੇ ਇਹ ਬੇਸਿਕਲੀ ਸਾਰੇ ਇਹ ਇਹ ਪ੍ਰਚਾਰ ਦੇ ਖਿਲਾਫ ਸੀ ਉਹ ਧੜਾ ਇਹ ਸਾਰਾ ਜਿਹੜਾ ਅੱਜ ਕਾਬਜਾ ਜਿਹੜਾ ਅੱਜ ਕਾਬਜਾ ਪਿੱਛੇ ਤੇ ਕਾਬਜਾ ਆ ਆਖਾਤ ਨਾਲ ਫਿਰ ਮੁੱਲ ਨੇ ਹਾਂ ਫਿਰ ਇੱਕ ਵੀ ਵੀਰ ਸਾਡੇ ਕੋਲ ਨਹੀਂ ਆਜ ਜਿਹੜੀ ਗੁਰੂ ਘਰ ਦੇ ਸੁਣੀ ਨੂੰ ਇਹਨਾਂ ਨੇ ਖਦਮ ਕੀਤੀਆਂ ਨਾ ਕੋਈ ਤਾਂ ਮੁਸਲਮਾਨਾਂ ਨੇ ਕਿਹਾ ਇਹਨਾਂ ਨੇ ਕਿਹਾ ਕੋਈ ਵੀ ਲੋਸ ਸਾਰੇ ਨਾ ਖਦਮ ਤਾਂ ਕਿ ਰਾਮ ਜੀ ਉਹ ਈ ਗੱਲ ਪੈ ਜਾਏ ਕੋਈ ਵੀ ਉਹ ਬਾਣੀ ਕਿਹੜੀ ਪੜੀ ਜੀ ਉਹ ਸਾਰੇ ਨਾਲੇ ਸੀ ਤੇ ਰੌਲੇ ਕੋਈ ਤੇ ਆਸਰ ਹੁਣ ਰੌਲਾ ਠੀਕ ਵੀ ਹੋ ਸਕਦਾ ਉਹ ਜਈ ਪੈਦਾ ਹੋ ਜਾਣਗੇ ਜਿਵੇਂ ਲਿਖੀ ਹੈ ਹੋਏ ਉਹਦੀ ਜੇ ਹੋਏ ਤਾਂ ਖੜਨਾ ਵੀ ਤੁਸੀਂ ਪੂਰੇ ਜੇ ਖੜੋਗੇ ਪੂਰੇ ਫੇਰ ਪਤਾ ਲੱਗੂ ਇਹ ਉਹ ਨਾ ਤਾਂ ਫਰਕ ਆ अगमोधि प्रानी कुछ भी मां बोलि नहीं पहुंच सकत हूं यही कुछ बोल रहे पढ़-पढ़ के यही कुछ वाणी पढ़-पढ़ के छा रख रहे अगम अगोचर प्रभु निर्बानी प्रभ अगम अगम आद पार ब्रह्म सोए जो जो कहे तूर्णा तूर्णा तू अगम नहीं मनता जावे मन तू नहीं मैं पहुंचूं कबूर से तू अगोचर नहीं बनदा ਹੋਚਰ ਮਨ ਦਾ ਤਾ ਤੂੰ ਆਪਣੀ ਕੋਸ਼ਿਸ਼ ਛੱਡ ਦੰਦੋ ਜਤਨ ਛੱਡ ਦੰਦੋ ਜਤਨ ਤਾਂ ਤਾਂ ਬਧਰੇ ਕਿ ਤੈਨੂੰ ਸੁੱਖ ਦੇ ਹੀ ਦੇਖਦਾ ਜਤਨ ਬਹੁਤ ਸੁੱਖ ਹੋਈਏ ਸੁੱਖ ਕੋ ਸੁੱਖ ਮਿਲਿਆ ਦੁੱਖ ਕੋ ਕਿਉ ਹਰ ਭਾਵੈ ਸੋ ਹੋਇਆ ਕਿ ਹਰ ਭਾਵੂ ਹਾਏ ਮੋ ਜੰਨਾ ਪਾਉਗਾ ਤਾਂ ਜਿਹੜੀ ਐਂਟਰੀਆਂ ਨੇ ਹੁਣੇ ਹੋ ਨਹੀਂ ਹੋਈਆਂ। ਉੱਥੇ ਵੀ ਹਰ ਪਾਵੇ ਸੋ ਹੋਈਆ। ਇੱਥੇ ਵੀ ਹਰ ਪਾਵੇ ਸੋ ਹੋਈਆ। ਪਰ ਇਹ ਕਹਿੰਦਾ ਮੈਂ ਆਪਣੀ ਬਸਤੀ ਨਾ ਆਦਤ ਹੈ ਨਾ। ਇਹਨੂੰ ਆਦਤ ਕੀ ਹੈ? ਅਜੋ ਮਾਨਵਾਸੀ ਰਾਜ ਹੈ। ਸਿੱਖ ਬਣ ਕੇ ਵੀ ਮਾਨਵਾਸੀ ਰਾਜ ਹੈ। ਬਾਕੀ ਹੈ ਹੁਕਮ ਤੋਂ ਗੁਣ ਵੀ ਬਾਕੀ ਹੈ। ਤਾਲਮਕਾ ਹੁਕਮ ਤੋਂ ਫਿਰ ਵੀ ਬਾਕੀ ਹੈ। ਹੁਕਮਨ ਨੂੰ ਡਰ ਨਹੀਂ ਹੈ ਕੋਈ ਮੈਂ ਆਪਣੀ ਮਰਜ਼ੀ ਨਾਲ ਐਕਟਰੀ ਕਰ ਲੂਗਾ ਨਾਲਾ ਫੇਰ ਕੇ ਕਿਹਾ ਵੈਗਰੂ ਵੈਰੂ ਕਰਕੇ ਅਜੋ ਵੀ ਇਸ ਜਿੱਦ ਅਸੀਂ ਖੜੇ ਨੇ ਲੋਕ ਹੁਕਮ ਦੇ ਵਿਰੋਧ ਕਰੇ ਗੁਰੂ ਕਾ ਹੁਕਮ ਦੇ ਵਿੱਚ ਰਹਿਣ ਦਾ ਉਪਦੇਸ਼ ਇਹ ਹੁਕਮ ਦੇ ਵਿਰੋਧ ਛੜੇ ਨੇ ਆਈ ਦੋਹਾਂ ਦੇ ਵਿੱਚ ਫਰਕ ਹੈ ਇਹ ਹੁਕਮ ਤੋਂ ਵਿਰੋਧ ਵਾਲੇ ਨੇ ਗੁਰੂ ਕਾ ਹੁਕਮ ਹੈ ਬਣਾਉਣ ਹੈ ਨਿਰਾਹਾਰ ਨਿਰਵੈਰ ਸੁਖਦਾਈ ਨਿਰਾਹਾਰ ਨਿਰਵੈਰ ਸੁਖਦਾਈ ਦਾ ਕੀ ਕੀਮਤ ਕਿਹਨੇ ਨਾ ਪਾਈ ਜਿਹੜਾ ਨਿਰਾਹਾਰ ਹੈ ਨਿਰਾਹਾਰ ਕੀ ਹੈ ਆਹਾਰ ਕੀ ਹੁੰਦਾ ਆਹਾਰੇ ਮਾਇਆ ਦਾ ਕਿਰਪਾ ਨਹੀਂ ਜਿਦਾਂ ਗਿਆਨ ਭੋਜਨ ਜਾਂਦਾ ਭੋਜਨ ਬਾਰ ਨੂੰ ਦੱਸੋ ਜਿਹੜੀ ਕਿ ਪਹਿਲਾਂ ਹੁੰਦਾ ਜਿਦੋਂ ਤਾਂ ਪੈਦਾ ਨਹੀਂ ਹੁੰਦਾ ਪਾਣੀ ਜਿਹੜਾ ਕਹਿੰਦੇ ਨਹੀਂ ਪੈਦਾ ਹੁੰਦਾ ਇਹ ਟੀਨ ਬਲੌਏ ਦੇ ਪੈਦਾ ਹੁੰਦਾ ਦੁੱਧ ਬਲੌਏ ਤਾਂ ਨਹੀਂ ਪੈਦਾ ਹੁੰਦਾ ਖੀਰ ਹੋਰ ਚੀਜ਼ਾਂ ਦੁੱਧ ਹੋਰ ਚੀਜ਼ਾਂ ਇਹ ਦਰਗਾਹੀ ਦੁੱਧ ਅਦੁੱਧ ਜਿਹੜਾ ਹੁੰਦਾ ਵੀ ਜੈ ਸਗਲ ਦੁੱਧ ਆ ਇਹ ਸਰ ਦੁੱਧ ਦਾ ਵਜਹ ਹੈ ਜੇ ਸਗਲ ਦੁੱਧ ਦੁੱਧ ਅਗੜ ਜਾਨਵਰਾਂ ਨੇ ਦੁੱਧ ਨਹੀਂ ਇਹ ਦੁੱਧ ਕੀ ਦਾ ਇਹ ਉਹ ਕਪੜਾ ਲਗਾ ਹੈ ਨਾ ਮੈਂ ਦੁੱਧ ਦੇ ਨਾਮ ਦਾ ਬਣਾ ਚੋ ਕੇ ਲੈਂਦੀ ਸੀ ਇਹਦਾ ਉਹਦਾ ਉਹਦਾ ਉਹ ਖੀਰ ਆ ਉਹਦਾ ਨਾਮ ਖੀਰ ਉਹ ਖੀਰ ਦਾ ਸਾਗਰ ਹੈ ਉहां ਪਰ ਆਇਆ ਸਾਗਰ ਹੈ ਸੁਦਰ ਨਹੀਂ ਆਇਆ ਖੀਰ ਸਾਗਰ ਗਿਆ ਸਾਗਰ ਆ ਉਹ ਸਾਗਰ ਦੀ ਬਾਉਂਡਰੀ ਨਹੀਂ ਹੁੰਦੀ ਸੁਦਰ ਦੀ ਬਾਉਂਡਰੀ ਹੁੰਦੀ ਹੈ ਇਹ ਕੀ ਜਾਣ ਨਕੀ ਕੀ ਲਿਖਿਆ ਉੱਥੇ ਸਾਗਰ ਕਿਉਂ ਹੈ ਸੁਦਰ ਕਿਉਂ ਹੈ ਨਹੀਂ ਪਤਾ ਇਹ ਬڑے بڑے ਜਿਹੜੇ ਕਹਿੰਦੇ ਕਹੁੰਦੇ ਨੇ ਨਾ ਸੰਤ ਆਪਣੇ ਆਪ ਨੂੰ ਸਮਝਦੇ ਉਹ ਐ ਵੜਨਾਂ ਕਿ ਬਿਲਕੁਲ ਹੀ ਅਗਿਆਦੀ ਦੇ ਕੱਚੀ ਪਤਾ ਨਹੀਂ ਕਿਉਂ ਗਿਆਨ ਗਵਾ ਲਿਆ ਫਟਤਰੋਹਾ ਦੋਹੇ ਹਤੀ ਗਿਆਨ ਗਵਾ ਲਿਆ ਕਿਉਂ ਉਹ ਗਿਆਨ ਗਵਾਇਆ ਦੁਜੇ ਪਾਇਆ ਦਰਬ ਗੜੇ ਬਖ ਮਾਇਆ ਪਿੱਛੇ ਬੜਬੜੀਆਂ ਪਿਛਾਲੇ ਬੜੀ ਬੜੀ ਮਾਇਆ ਜਾਂ ਤਾਂ ਬੋਲੇ ਤੁਸੀਂ ਆਇਆ ਪਿੱਛੇ ਲੱਗ ਕੇ ਮਾਇਆ ਦੀ ਕਦਰ ਹੈ ਤੁਹਾਡੇ ਕੋਲ ਕੌਣ ਕਹਾ ਮਾਇਆ ਬੜੀ ਤੁਸੀਂ ਗੱਲਾਂ ਕਰਦੇ ਹੋ ਜਾਂਦੀਆਂ ਜਾਂ ਜਿਮਾਰ ਖਾਜੇ ਹੋ ਤੁਸੀਂ ਜਾਂ ਬੋਲੇ ਜਾਂ ਸੀ ਭੇਦ ਵਿੱਚੋਂ ਤੁਸੀਂ ਛੱਡ ਬੈਠੇ ਪੜਤ ਤਰੋ ਮੈਂ ਜਾਨ ਗਵਾਇਆ ਜਾਂ ਤਾਂ ਪੜਤ ਤਾ ਕਵੀਰੋਂ ਨਾ ਮੂਰੇ ਰੋਏ ਨੇ ਪਿੱਛੇ ਨੇ ਦਰਦ ਨੇ ਤੁਸੀਂ ਜਾਨ ਵਾਲਿਆ ਐਵਨਿ ਰੁਬਦਾਸ ਨੂੰ ਦਰਨੋਦ ਕਰਤੀ ਪਹੁੰਚਾ ਹੈ। ਗਿਆਨ ਘੁਆਇਆ ਹੈ ਸੀ ਤਾਂ ਦਰਨੋਦ ਕੀਤੀ ਹੈ। ਕਾਇਸਿਟ ਕੀਤੀ ਹੈ ਪਰ ਉਹ ਕੋੜ ਨਾ ਜਾ ਕੋਹ ਨਹੀਂ ਕੀਤੀ। ਥੋੜਾ ਹੁਣ ਦੇਖ ਲੋ ਹੁਣ ਹੋ ਜੂ ਦਰਨੋਦ। ਚਲੋ ਸੁਪਰੀਮ ਕੋਰਟ ਹੋ ਜੂ ਦਰਨੋਦ ਪਤਾ ਲੱਗ ਗਿਆ ਨਜੀਲ ਨਿਕਲ ਗਈ। ਖਾੜਾ ਤਾਂ ਫੱਟ ਗਿਆ। ਤਾਂ ਖਾੜਾ ਹੀ ਹੋ ਗਿਆ ਉਥੇ ਪਹਿਲਵਾਨ ਹੋਣਗੇ। ਲੜਾਈ ਕਾਦੀ ਹੈ। ਗਿਆਨ ਚਰਚਾ ਦੀ ਕੋਈ ਲੜਾਈ ਹੁੰਦੀ ਹੈ। ਪਤਾ ਲੱਗੂ ਦੌਰਾਂ ਤੋਂ ਤੇ ਨਜ਼ਰ ਹੋ ਰਾ ਕੀ ਕਰਵਾਇਆ ساری ਜ਼ਿੰਦਗੀ ਤੁਸੀਂ ਵਿਆਹ ਨਹੀਂ ਕਰਵਾਇਆ ਸ਼ਕਤੀ ਤੁਹਾਡੇ ਤੋਂ ਨਹੀਂ ਚਾਹੀਦੀ ਜਨਾ ਪਤਾ ਗਲੇ ਬੇਖਾਇਆ ਮਾਇਆ ਬੇਖਾਲੀ ਗਰਭ ਗੜ ਕੇ ਹੰਕਾਰ ਕੇ ਮੇਰਾ ਹਾਰ ਨਿਰਬੈਰ ਸੁਖदाई ਮੇਰਾ ਹਾਰ ਸੁਖਦਾਈ ਹੈ ਤਾਂ ਕਿ ਕੀਮਤ ਕਿਨੇ ਨਾ ਪਾਈ ਤਾਂ ਕਿ ਜਿੰਮਤ ਕਿਨੇ ਨਾ ਪਾਈ ਜਿਹੜਾ ਬੈਰ ਭਰੋਤ ਤੋਂ ਪਰੇ ਹੈ ਉਹ ਕੌਣ ਹੈ ਉਹ ਹੀ ਆ ਸਤਪੁਰਖ ਪੂਰਨ है ਜਿਹੜਾ ਸਤਪੁਰਖ ਪੂਰਨ ਵਿਵੇਕਾ ਉਹ ਹੀ ਦਰਿਹਾਰ ਕੋਈ ਦਰਵਾਰ ਸੁਖ ਸਾਗਰ ਵਿੱਚ ਨਾ ਰਹਿਣਾ ਆ ਅਦਰ ਅਦਰ ਵੈਰ ਸੁਖ ਦਾਈ ਤਾਂ ਕਿ ਕੀਮਤ ਕਿਨੇ ਨਾ ਭਾਈ ਤਾਂ ਕਿ ਜਿੰਮੜ ਇਹਦਾ ਦਰਸ਼ਨ ਸਫਲ ਆ ਆ ਜਿਹੜਾ ਹੈ ਨਰਾਹਤ ਦੇ ਇਹਦਾ ਦਰਸ਼ਨ ਸਫਲ ਹੈ ਦਰਸ਼ਨ ਸਫਲ ਦੇਖਤ ਸੁਣੀਏ ਦੇਖਤ ਸੁਣੀਏ ਇਹ ਜਿਹੜਾ ਹੈ ਖਰਾਕ ਉਹ ਕੁਣੀਤ ਹੀ ਨਾ ਸਤਿਗੁਰੂ ਜੀ ਨੇ ਜਾਣ ਲਿਆ ਉਹਦੀ ਗੱਲ ਜਾਣ ਲਈ ਹਾਂ ਸਤਿਗੁਰੂ ਜੀ ਤੋਂ ਲਾਉਂਦੇ ਹਾਂ ਹਨੇਕ ਭਗਤ ਬੰਦਨ ਨੂੰ ਨਿਤ ਕਰੇ ਬ੍ਰਹਮਾ ਨਾ ਬ੍ਰਹਮੂ ਬ੍ਰਹਮਣੇ ਰਾਹਾ ਬੀਉਂਦਾ ਬ੍ਰਹਮਣੇ ਹੁੰਦਾ ਬ੍ਰਹਮ ਦਾ ਬੈਠਾ ਪੱਖੇ ਪਾਉ ਆ ਹਵਾ ਖਾਂਦਾ ਹੁੰਦਾ ਉਹ ਕੋਣਾ ਆ ਹੈ ਪੌਣਾ ਆਰੀ ਤੇ ਹਾਲ ਨਹੀਂ ਹੁੰਦਾ ਤੇਰਾ ਹਾਲ ਇਹ ਦੁਕਾਂ ਦੀ ਗੱਲ ਹੈ ਪੌਣਾ ਨਿਰਾਰ ਨਹੀਂ ਹੁੰਦਾ ਜਿਹੜਾ ਜਦ ਸਰੀਰ ਤੇ ਉਹਨਾਂ ਜਿਹੜੇ ਤੇਰਾ ਹਾਲੀਏ ਪੌਣਾ ਆਰੀਏ ਸਿਰ ਛੱਕਮ ਤੋਂ ਬਾਅਦ ਦੀ ਗੱਲ ਹੈ ਹਾਂ ਤੇਰਾ ਉਹ ਤਾਂ ਦੱਸ ਰਿਹਾ ਇੱਕ ਤਾਂ ਜਿਹੜਾ ਦੱਸ ਰਿਹਾ ਉਹ ਆਪ ਨਹੀਂ ਹੈ ਜਿਹੜਾ ਬੋਲ ਰਿਹਾ ਉਹ ਨਹੀਂ ਹੈ ਇਹ ਉਹ ਤੋਂ ਕਹਾਂ ਹਾਏ ਵੀ ਪਰ ਸੀ ਛੱਡੇ ਤੋਂ ਬਾਅਦ ਦੀ ਗੱਲ ਲਉਗੀ ਅਵਸਰ ਸੀ ਛੱਡੇ ਦੇ ਬਾਅਦ ਆਨੇ ਦੇ ਹਲੋਂ ਦਾ ਲਈ ਰਿਆ ਨਾ ਉਹ ਤਾਂ ਸਾਹ ਲੈ ਰਿਹਾ ਤੇ ਬੈਠਾ ਪੱਖੇ ਪਾਉ ਬਹੁਤ ਖਤਰਨਾਕ ਬਹੁਤ ਹੀ ਬ੍ਰਿਸ਼ੀਆਂ ਨੇ ਪਰ ਪਰ ਤੇ ਮੂੰਹ ਭਾਰ ਗਰੋਂਗੇ ਪੋਜਨਾ ਰਾ ਜੇ ਤੂੰ ਕਹਤਾ ਇੱਕ ਪਾਸੇ ਤੁਸੀਂ ਕਹਿੰਦੇ ਨਾਨਕ ਬੈਠਾ ਪੱਖੇ ਪਾਉ ਇੱਕ ਪਾਸੇ ਤੁਸੀਂ ਕਹਿੰਦੇ ਨਿਹਾਰ ਹੈ ਤੇ ਤੂੰ ਕੋਲ ਜਵਾਬ ਹੀ ਨਹੀਂ ਹੁਣਾ ਫਿਰ ਜਵਾਬ ਹੀ ਨਹੀਂ ਹੁਣਾ ਕੋਲ ਫਿਰ ਉੱਥੋਂ ਇਹਨਾਂ ਨੂੰ ਮਾਰ ਸਾਰਿਆਂ ਦੇ ਹੀ ਨੇ ਸਵਾਲ ਕਰਨ ਨੂੰ ਸਾਰਿਆਂ ਦੇ ਦਿਲਾਂ ਹੁੰਦੇ ਨੇ ਸਵਾਲ ਲਪੜੇ ਨੇ ਹੁੰਦੇ ਨੇ ਸਵਾਲ ਲਪੜਾ ਕੋਈ ਔਖਾ ਨਹੀਂ ਝੂਠ ਨੂੰ ਦੇਖਣਾ ਕੋਈ ਔਖਾ ਨਹੀਂ ਹਾਂ ਬ੍ਰਿਸ਼ਿਆ ਨੇ ਉਹ ਗਾਂ ਦਾ ਕਿ ਬ੍ਰਿਸ਼ ਸਵਾਲ ਸੁਣਾਏ ਪਤਾ ਉਹਨੇ ਲਗਣਾ ਤਾਂ ਅਗੂ ਬ੍ਰਿਸ਼ ਸਵਾਲ ਉਖੜਿਆ ਰਹਾ ਨਹੀਂ ਹੁੰਦਾ ਹੋ ਇਹ ਤੇਰਾ ਹਾਰਾ ਬਿਲਕੁਲ ਮਾਇਆ ਦਾ ਲੇਪ ਨਹੀਂ ਉਹ ਮਾਇਆ ਕੇ ਸੰਗ ਦੇ ਲੇਪ ਮੂੰ ਮਾਇਆ ਕੇ ਉਹ ਉਹ ਵਾਲਾ ਕੇ ਸੰਗਰਾ ਲੈ ਜਾਦਾ ਜਾਂ ਸ਼ਰੀਰ ਛੱਡ ਦੂ ਉਹ ਤੋਂ ਪਹਿਲਾਂ ਹੀ ਆ ਪਹਿਲਾ ਵਾਲੇ ਨੂੰ ਅੰਕਾਰ ਵੀ ਕਹਿ ਸਕਦੇ ਸੀ ਇਹ ਨਾਂਦਰ ਨੂੰ ਜਾਂਦੇ ਨੇ ਹਾਂ ਨਹੀਂ ਕਹਿ ਸਕਦੇ ਉਹ ਸਾਹ ਲੈ ਰਹੇ ਬੋਲ ਰਹੇ ਹੋ ਰੋਟੀ ਖਾ ਰਹੇ ਸਭ ਕੁਝ ਕਰ ਰਹੇ ਇਸ ਕਰਕੇ ਉਹਨਾਂ ਨੇ ਆਪਣੇ ਆਪਣੀ ਡਿੱਬੀ ਥੱਲੇ ਰੱਖਿਆ ਉਹਨਾਂ ਨੇ ਉਹ ਸੱਚ ਬੋਲੇ ਨਾ ਉਹਨੂੰ ਧੁਰ ਹੋਣ ਦੀ ਲੋੜ ਨਹੀਂ ਸੀ ਜੋ ਹੈ ਉਹਨਾਂ ਨੇ ਦੱਸਤਾ ਕੁਰਾਨ ਸੱਚ ਬੋਲੇ ਇਤਨਾ ਨੇ ਕਿ ਆਦਮੀ ਰੂਪ ਬਣਾਉਣਾ ਸੀ ਉਥੇ ਵਾਲਾ ਉਹ ਗਾਇਬ ਕਰਦੀ ਸੀ ਇਹਨਾਂ ਦੀ ਸਾਜ਼ਿਸ਼ ਹੈ ਇਹਨਾਂ ਨੇ ਆਦਿ ਨੂੰ ਸਾਫ ਕਰਨਾ ਤਾਂ ਆਦਮੀ ਨਾਂ ਨੂੰ ਸਾਫ ਕਰਦਾ ਇਹਨਾਂ ਦੇ ਤਾਂ ਬਾਈ ਤੇ ਦੇਵੀ ਦੇਵੀ ਤੇ ਦੇਵੀ ਦੇਵੀ ਤੇ ਮੈਂ ਦੇਵੀ ਦੇਵ ਦੇ ਬਚਾਵਾ ਕੇ ਸਾਰਾ ਸਾਡਾ ਧਰਮ ਨਾ ਬਚਲੇ ਇੱਥੇ ਵੀ ਸੂਈ ਰੱਖਣੀ ਆ ਕੋਈ ਦੇਵੀ ਦੇਵਤਾ ਨਾ ਬਚਵੇ ਅਜੇ ਨਾ ਕੋਈ ਗੁਰਬਾਣੀ ਨੇ ਬਚਣ ਦਿੱਤੀ ਸਾਡੀ ਗਲਤੀ ਨਾ ਬਚੂਗੀ ਵਕੀਲ ਦੀ ਗਲਤੀ ਨਾ ਹੁਣ ਫੇਲ ਹੋਊਗਾ ਕੇਸ ਕੇ ਸਾਡਾ ਕਿੱਥੇ ਹੋਇਆ ਗੁਰਬਾਣੀ ਨਾਲ ਜਿੱਥੇ ਆ ਸਾਡੇ ਜਿਹੜੇ ਕਥਾਵਾਚਕ ਵਕੀਲ ਨੇ ਵੇਖਿਆ ਕਰਨ ਵਾਲੇ ਨੇ ਉਹਨਾਂ ਦੀ ਗਲਤੀ ਨਾਲ ਸੀ ਬਾਜੀ ਹਰੀ ਹੈ ساری ਘੜਿਆਂ ਇਹ ਵੇਖਿਆ ਕਰਨ ਦੀ ਗਲਤੀ ਨਾਲ ਬਾਜੀ ਹਰੀ ਹੋਈ ਸਾਡੀ ਵਰਨਾ ਬਾਜੀ ਦਾ ਸ਼ਿੱਤੀ ਹੋ ਗਿਆ ਵੇਖਿਆ ਜੀ ਦੁਆਰਾ ਖੱਲੇ ਉਹ ਉਹ ਜਿਹੜੇ ਨੇ ਉਸੇ ਵੇਖਿਆ ਕਰਨ ਵਾਲੇ ਉਹਨਾਂ ਦੀ ਬਲੀ ਕੋਈ ਅੰਦਰ ਆ ਰਿਹਾ ਸੈਸ ਨਾਲ ਸਾਰਿਆਂ ਨੂੰ ਸਤ ਤਨ ਉਹ ਫਸ ਗਏ ਮਾਤਾ ਦੇ ਨੇ ਦੰਗਲ ਤੇ ਨੇ ਨਹੀਂ ਮਨਦੇ ਕਫਾਲ ਨਾ ਮਸੇ ਪਾਪੇ ਕੇ ਕਰੋੜਾਂ ਆ ਗਏ ਨੇ ਜੁਰਤ ਪਸੇ ਉਹ ਵੀ ਕਰੋੜਾਂ ਨੇ ਉਹਦੇ ਸਿੱਧ ਫਸ ਗਈ ਹੁਣ ਇਹ ਦੇਖਦੇ ਨੇ ਕਿ ਤੁਸੀਂ ਜਾਂਦੇ ਤੇ ਕੋਈ ਆਉਂਦਾ ਪੱਲੇ ਕੁਛ ਨਹੀਂ ਇਹਨਾਂ ਨੂੰ ਪੁੱਛਣਾ ਵੀ ਕਿਸੇ ਨੇ ਕੰਦੀਆਂ ਨੂੰ ਨੂੰ ਅਕਲ ਤੋਂ ਖਾਲੀ ਨੇ ਅਕਲ ਹੀ ਨੇ ਜਿਹੜਾ ਇੱਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਜਿਹੜਾ ਇੱਕ ਉਸਤਤਾਨ ਹੈ ਜਿਹਨੇ ਸਤਪੁਰਖ ਜਾਣਿਆ ਨਾ ਉਹਨੇ ਉਹ ਸਤਪੁਰਖ ਪਰ ਉਹਦੇ ਕੋਲ ਵੀ ਉਹ ਵੀ ਆਪਣੇ ਆਪ ਚੱਕੋ ਕਰਨਾ ਜੀਵ ਆਤਮਾ ਇੱਕ ਕਰਨ ਦੇ ਬਰਾਬਰ ਹੁੰਦੀ ਹੈ ਅਸਲ ਜੀਵ ਦਾ ਹਸ ਜੀਵ ਦੀ ਹੈਗਾ ਜੀਵਤਾਇ ਤੇ ਰਹੂਗੀ ਜੀਵਤਾਇ ਕੋਈ ਰਹੂਗੀ ਆਤਮਾ ਨੇ ਸਾਡੇ ਕਰਨ ਕੋਈ ਨਹੀਂ ਇਹ ਸੂਰਜ ਦੇ ਕਰਨ ਹੁੰਦੀ ਹੈ ਅੰਸ਼ ਅੰਸ਼ਵਤਾ ਰਹ ਅੰਸ਼ਵਤਾ ਕਹਿੰਦੇ ਹੈ ਅਨਸਾ ਉਤਾਰ ਕਹਤੇ ਤੇ ਅਨਸਾ ਉਤਾਰ ਕਿ ਨਹੀਂ ਜਿਹੜਾ ਭਗਤੋ ਤਾਂ ਅਨਸਾ ਉਤਾਰ ਹੁੰਦਾ ਅੰਸ਼ਿਕ ਤੌਰ ਤੇ ਉਤਾਰ ਹੈ ਪੂਰਾ ਉਤਾਰ ਨਹੀਂ ਹੈ ਅੰਸ਼ਿਕ ਤੌਰ ਤੇ ਉਤਾਰ ਹੈ ਉਤਾਰ ਹੁੰਦਾ ਦੇਹਤਾਰੀ ਅੰਸ਼ ਹੁੰਦਾ ਦੇਹਤਾਰੀ ਜਿਹੜੀ ਆਤਮਾ ਦੀ ਦੇਹ ਹੈ ਸ਼ਬਦ ਹੁੰਦਾ ਜਿਹੜਾ ਇੱਕ ਹੋ ਕੇ ਉੱਗਿਆ ਉਹ ਹੀ ਉਹਦਾ ਸ਼ਰੀਰ ਸਤਗੁਰ ਕਾ ਜੋ ਜਨਮ ਸਤਗੁਰ ਕੇ ਜਨਮ ਆਣਾ ਕੋਈ ਸ਼ਰੀਰ ਉਹਦਾ ਉਹ ਅੰਸ਼ਾ ਅਵਤਾਰ ਹੈ ਸ੍ਰੀ ਸ਼ਬਦ ਰੂਪ ਹੈ ਉਹ ਜਿਹੜਾ ਸ਼ਬਦ ਸੱਚਖੰਡ ਦਾ ਉਹਦਾ ਅੰਸ਼ਾ ਹੈ ਕਿਉਂਕਿ ਉਹ ਸੱਚਖੰਡ ਦਾ ਸ਼ਬਦ ਤਾਂ ਸਾਰਿਆਂ ਵਾਸਤੇ ਹੀ ਹੈ ਨਾ ਕੀ ਯਾੜ ਕੀ ਈਤਨ ਵਾਸਤੇ ਇਹਦੇ ਕੋਲ ਜਿਹੜਾ ਸ਼ਬਦ ਪ੍ਰਗਟ ਹੋਇਆ ਸਿਰਫ ਆਦਮੀ ਵਾਸਤੇ ਹੋਇਆ ਆਦਮੀ ਦੀ ਵੀ ਉਹ ਏਰੀਏ ਦੇ ਵਾਸਤੇ ਹੈ ਜਿਹੜੀ ਇਹ ਬੋਲੀ ਸਮਝਦਾ ਜਿਹੜੀ ਬੋਲੀ ਕੇ ਬੋਲਦਾ ਜਿਹੜੀ ਸਾਡੀ ਪੰਜਾਬੀ ਆ ਬੋਲੀ ਨੂੰ ਨਹੀਂ ਸਮਝਦੇ ਉਹਨਾਂ ਵਾਸਤੇ ਵੀ ਬੋਲਿਆ ਗਿਆ ਉਹਨਾਂ ਤਾਂ ਸਮਝ ਨਹੀਂ ਸਕਦਾ ਇਸ ਕਰਕੇ ਕਿਣਕਾਏ ਤਕੀਸ ਜੀ ਨੂੰ ਸਾਹ ਰਕੇ ਹਾਂ ਕਿ ਕਿਣਕਾਏ ਕਿ ਅੰਸਕਣ ਕਾਏ ਹੁੰਦਾ ਨਾ ਅੰਸਕਣ ਕਾਏ ਕਿਣ ਕਾਮਾ ਤਰਲੋਂ ਕਾਹ ਰੂ ਜੀਵਾਨੂ ਐ ਬਰੇ ਦੇ ਸਕਦੇ ਆ ਸੀ ਥੋੜੇ ਜੇ ਆਦਮਿਆਂ ਨੂੰ ਆਪਣੇ ਦੇ ਸਕਦੇ ਆ ਸੀ ਇਹ ਸਤਿਗੁਰੂ ਪ੍ਰਗਟ ਹੋਈ ਜਿੱਥੇ ਸਤਿਗੁਰੂ ਪ੍ਰਗਟ ਵੀ ਹੋਈ ਹੋਏ ਕਿੰਨੇ ਆ ਬੰਦੇ ਤੂੰ ਜਿਹੜੇ ਪੰਜਾਬੀ ਸਮਝਦੇ ਨੇ ਗੁਰਬਾਣੀ ਦੀ ਭਾਸ਼ਾ ਸਮਝਦੇ ਨੇ ਉਹਨਾਂ ਬੇਤੂ ਰੇਜੀ ਵਾਲਿਆਂ ਨੂੰ ਕਮੇ ਦੇ ਦੂ। 45 ਹਵਾਂ ਗੱਦਰੀਆਂ ਆਟੋਮੈਟ ਬਾਕੀ ਜਾਨਵਰ ਨੇ ਸਾਰਿਆਂ ਨੂੰ ਕਮੇ ਦੇ ਦੂ। 84 ਲੱਖ ਜੂ ਇਹਨਾਂ ਨੂੰ ਕਮੇ ਦੇ ਦੂ। ਇਹ ਕੋਈ ਬਹੁਤ ਬੜੀ ਗੱਲ ਨਹੀਂ ਹੈ ਜੀ। ਬਹੁਤ ਬੜੀ ਗੱਲ ਨਹੀਂ ਹੈ। ਇਹ ਗੱਲ ਪਰ ਇਹਦੀ ਲੋੜ ਹੈ ਆਦਮੀ ਵਾਸਤੇ ਸੀ। ਇਹ ਤੇ ਲੋਡ ਵੀ ਆਜ਼ਮ ਵਾਸਤੇ ਹੀ ਹੈ ਕਿਉਂਕਿ ਫਾਈਨਲ ਪੌੜੀ ਦੀ ਆਖਰੀ ਪੌੜੀ ਦਾ ਅਵਦੇਸ਼ ਹੈ ਉਹਨੇ ਸਾਰੀਆਂ ਪੌੜੀਆਂ ਵਾਲੇ ਨੂੰ ਅਵਦੇਸ਼ ਹੈ ਥੱਲੇ ਦੁਪਰ ਤੱਕ ਉਹਨੇ ਜੂੜੇ ਚੰਦ ਨਹੀਂ ਵੀ ਡਾਇਰੈਕਸ਼ਨ ਦੇਣੀਆਂ ਵੀ ਇਦਾਂ ਨੂੰ ਨਹੀਂ ਜਾਣ ਐਂ ਇਹ ਤਾਂ ਗੱਲ ਨਹੀਂ ਹੋਣਾ ਉਹਨੇ ਹੁਣਾਂ ਤੇ ਵੀ ਧਿਆਨ ਰੱਖੋ ਰੱਖਣਾ ਨਹੀਂ ਧਿਆਨ ਵਾਲੇ ਜੋੜ ਕੇ ਰੱਖਣਾ ਆਪਣੀ ਧਿਆਨ ਦੀ ਸ਼ਕਤੀ ਨਾਲ ਉਹਨੂੰ ਕੰਟਰੋਲ ਕਰਨਾ ਹੈ ਇਹ ਪਾਵਰ ਆਦਮੀ ਕੋਲ ਨਹੀਂ ਹੈ ਕਦੇ ਵੀ ਨਾ ਹੋ ਸਕਦੀ ਹੈ। ਹਰ ਵੀ ਕੋਲ ਨਹੀਂ ਹੈ ਪਾਵਰ ਉਸ। ਪਤਾ ਨਹੀਂ ਕਿਉਂ ਆਦਮੀ ਦੇ ਦਿਮਾਗ ਦੇ ਅਜੀਬੇ ਭਾਵੇਂ ਜਿਵੇਂ ਤੁਸੀਂ ਸਮਝਾ ਇਹ ਸਰਦਾਰਾਂ ਦੇ ਦਿਮਾਗ ਕਿਉਂ ਆ ਜਾਂਦਾ ਵੀ ਰਫੂ ਬਸ ਕਰ ਲਈਦਾ। ਅਸਲ 'ਚ ਉਹਨਾਂ ਨੂੰ ਗਿਆਨ ਹੈ ਕੋਈ ਨਹੀਂ। ਜਿਹਨੂੰ ਗਿਆਨ ਹੋ ਜਾਂਦਾ ਉਹ ਤਾਂ ਧੀਏ ਗੱਲ ਕਹਿਦਾ। ਜਿਹਨੂੰ ਗਿਆਨ ਰਿਐਕਸ਼ਨ ਕਰ ਜਾਂਦਾ ਹੈ ਦੋਈ ਰਿਐਕਸ਼ਨ ਵੀ ਕਰ ਜਾਂਦੀ ਹੈ ਨਾ ਜਿਹਨੂੰ ਗਿਆਨ ਰਿਐਕਸ਼ਨ ਕਰ ਜਾਂਦਾ ਹੈ ਰਿਐਕਸ਼ਨ ਗਿਆਨ ਕਰਦਾ ਅਹੰਕਾਰ ਹੋ ਜਾਂਦਾ ਉਹਨੂੰ ਫਿਰ ਵੀ ਬਾਇ ਇੱਕ ਨਹੀਂ ਬੰਦਾ ਹੋ ਉਥੇ ਵੀ ਸੂਰਜ ਕਰਨ ਮਿਲਿਆ ਹਾਂ ਸੂਰਜ ਕਰਨ ਮਿਲਿਆ ਸੂਰਜ ਦਾ ਕਰਨ ਫਿਰ ਉਹ ਇੱਕ ਨਹੀਂ ਬੰਦਾ ਹੈਗਾ ਫਿਰ ਆਪ ਨੂੰ ਮੈਂ ਮਾਇ ਮੰਨ ਲਾ ਸੋ ਉਹ ਫੁੱਟੀਆਂ ਵਾਲਾ ਫੇਲਦਾ ਵੀ ਹੁਣ ਮੈਂ ਬ੍ਰਹਮਾ ਨੂੰ ਮੈਂ ਮਾਲਕਿਆ ਗੱਲ ਬੀ ਮੈਂ ਸੁੰਝੇ ਨੀ ਜਾਂ ਦਰਿਆ ਜਾਵੜਿਆ ਸੋਪੇ ਮੈਂ ਸਮੁੰਦਰ ਹੀ ਨੂ ਸਬੂਤਾ ਤਾਂ ਤੇ ਤੋ ਪਹਿਲਾਂ ਮਿਲਦੀ ਜਤੂ ਉਹ ਜੋ ਪਿੱਛੇ ਹੀ ਸੀ ਤੂੰ ਉਹ ਕੀ ਸੀ ਅੱਜ ਤੂੰ ਇਹਦੇ ਨਾਲ ਡੁੱਟ ਕੇ ਸਮੁੰਦਰ ਕਿਵੇਂ ਬਣ ਗਿਆ ਸਮੁੰਦਰ ਦੇ ਬਾਲੇ ਕੋਸੇ ਦੱਸ ਕੀ ਹੈ ਕੋਈ ਹੋਰ ਵੀ ਬਦਲ ਕੇ तेरा आरा कोई इने सौ समुंदर दे सिया बड़या समुद्र च पताली तेरे वर्गे कत कत रे आवड़ ने दे दे दे आवड़ ने अपने औकात भूल गया तो कार च आके अपनी औकात भूल जाना औकात याद रहनी जरूरी है इत्ते पन्ने का एक ਕਣਵਾ ਦੀਜ ਕੀਟ ਕੋ ਰਾਜ ਦੇ ਛੋਟੀ ਗੱਲ ਦੀਜ ਚਰ ਕੀਟ ਕੀੜੀ ਵੀ ਕਹਿੰਦੇ ਉਜੋਤੇ ਨੇ ਜੀਟਾਂ 'ਚ ਵੀ ਉਜੋਤੇ ਨੇ ਕੀਟਾਂ 'ਚ ਵੀ ਨਹੀਂ ਜੁਤੇ ਜੀਂਜਰ ਕੀੜ ਦੋਏ ਰੱਖਦੇ ਜੀਂਜਰ ਕੋ ਨਾਨਕ ਵਾਲਾ ਕੀੜ ਦਸ ਪਾਸ਼ਾ ਵਾਲਾ ਦੋਏ ਜੋੜੇ ਨੇ ਇੱਥੇ ਕਦਮ ਪਾਛ ਨੇ ਨੀਜਨੀ ਵਿਜਾਇ ਕੀਟ ਜੋੜਦਾ ਵਿਚ ਪਲਾ ਆਇਆ ਹੋਇਆ ਨਾ ਕਾਲਕੁਰ ਬਾਜੀ ਸ੍ਰੀ ਦੇ ਪ੍ਰਤੀ ਹਾਂ ਉਹਨਾਂ ਨੇ ਆਪਣੇ ਨੀਜਨੀ ਲਾਇਆ ਕੀਟ ਲਾਤਾ ਇਹਨਾਂ ਨੇ ਨੀਜ ਲਾਇਆ ਗੱਲ ਇੱਕੋ ਹੀ ਹੈ ਪੰਜਵੇਂ ਪਾਛ ਨੇ ਨੀਜਾ ਕੀਟ ਇਕੱਠੇ ਕੀਤੇ ਸੀ ਕੁਰਬਾਨੀ ਕਬਰ ਰਚੀ ਹੋਈ ਜਾਏ ਜੀ ਕੋ ਹੋਰ ਕਿਸੇ ਨੇ ਕੀਟ ਕਿਹਾ ਨੀ ਉਹ ਤਾਂ ਕਿਹਾ ਫਕਤਾ ਨੇ ਕਿਹਾ ਹਮ ਬੱਪਰੇ ਜੈਸਾ ਕੀੜਾ ਹਮ ਦਾ ਹੈ ਜੈਸਾ ਕੀੜਾ ਰਬਦਾਸ ਨੇ ਵੀ ਕਿਹਾ ਕਲਾਂ ਕਿਹਾ ਸਾਰਿਆਂ ਨੇ ਪਰ ਕੀਟ ਨੇ ਸਿਬਰਤਿਆ ਉਹਨਾਂ ਨੇ ਨੀਚ ਉਰ ਕੀਟ ਇਕੱਠਾ ਇਹਨਾਂ ਨੇ ਅੱਡੋ ਅੱਡ ਵਰਸਤਾ ਪੰਜਵੇਂ ਪਾਸ਼ਾ ਨੇ ਇਕੱਠਾ ਕਰ ਨੀਚ ਕੀਟ ਆਪਣੀ ਹਜ਼ੀਅਤ ਭੁੱਲੇ ਨਹੀਂ ਤੇ ਸਭ ਪਾਸ਼ਾ ਵੀ ਆ ਕੇ ਹਾਜ਼ੀਅਤ ਨਹੀਂ ਬੋਲੇ ਹਾਜ਼ੀਅਤ ਨਹੀਂ ਬੋਲਣੇ ਜਾਈ। ਜਦ ਹਾਜ਼ੀਅਤ ਭੁੱਲ ਗਿਆ ਫਿਰ ਉਹ ਪਾੜ ਦੇ ਪੁਰਦਾਰ ਜੀ। ਫਿਰ ਰਿਐਕਸ਼ਨ ਕਰ ਜਾਂਦਾ ਗਿਆਨ ਸਾਰੇ ਮੰਨਦੇ ਨੇ ਕਿ ਹੰਕਾਰ ਕਰਦਾ ਪੈਗਾ। ਪਰ ਉਹਨਾਂ ਨੂੰ ਕਰਦਾ ਹੋਊਗਾ ਉਹਨਾਂ ਨੂੰ ਕਰਦਾ ਜਿਹੜੇ ਹਾਜ਼ੀਅਤ ਭੁੱਲ ਜਾਂਦੇ ਨੇ। ਅਸਲ ਜੋ ਉਹਨਾਂ ਲੋਕਾਂ ਵੱਲ ਦੇਖਦੇ ਨੇ ਜਿਹੜੇ ਉਹਨਾਂ ਨਾਲ ਜੂਨੀਅਰ ਦੇ। ਜਿਹੜੇ ਉਹਨਾਂ ਨਾਲ ਜੂਨੀਅਰ ਨੇ ਉਹਨਾਂ ਨੂੰ ਦੇਖਦੇ ਨੇ। ਉਹ ਜੂਨੀਅਰ ਵੱਲ ਨੂੰ ਨਾ ਦੇਖੋ ਆਪ ਤਾਂ ਸੀਨੀਅਰ ਵੱਲ ਨੂੰ ਦੇ ਜੂਨੀਅਰ ਵੱਲ ਦੇਖਣਾ ਫਿਰ ਤਾਂ ਤੈਨੂੰ ਖਾਰ ਹੋਈ ਜਾਂਦੀ ਸੀਨੀਅਰ ਵੱਲ ਦੇਖਦਾ ਸੀਨੀਅਰ ਕੰਨਾਟ ਕਰਦਾ ਤੇ ਸੀਨੀਅਰ ਵੱਲ ਦੇਖਦਾ ਥੱਕਣਾ ਹੋਏ ਤੇ ਮਾਤੇ ਦੇ ਤਾਂ ਗੱਲ ਮੰਦੀਏ ਜਿਹਦੀ ਗੱਲ ਮੰਦੀ ਦੀ ਆ ਉਹਦਾ ਦਾਸੇ ਹੁੰਦਾ ਜੇ ਦੀ ਗੱਲ ਮੰਨ ਲਈ ਆ ਉਹਦੇ 10 ਮਿੰਟ ਕੇ ਵੀ ਭੰਦੀ ਜਾ ਸਕਦੀ ਇਸ ਬਾਉਂਡਰੀ ਦੇ ਬਾਹਰ ਜੇ ਲੱਚਿਆ ਗਿਆ ਉਹ ਮਾਰੇ ਜਾਂਦੇ ਉਸ ਇੱਕ ਬਾਉਂਡਰੀ ਹੈ ਜਿਹਦੇ ਬਾਹਰ ਜੇ ਚਲਿਆ ਗਿਆ ਖਤਮ ਉਹ ਮਾਰਿਆ ਸਪੈਸ਼ਲ ਬਾਉਂਡਰੀ ਤੋੜ ਕੇ ਬਾਹਰ ਚਲਿਆ ਗਿਆ ਸੰਤ ਸਾਰੇ ਬਾਉਂਡਰੀ ਤੋੜ ਕੇ ਅਸਲ ਬਾਉਂਡਰੀ 'ਚ ਆਏ ਹੀ ਨਹੀਂ ਲੋੜੇ ਤੋਂ ਉਹ ਜਿਹੜਾ ਆਇਆ ਹੋਵੇ ਜਿਹੜਾ ਬਾਉਂਡਰੀ 'ਚ ਆ ਗਿਆ ਉਹ ਤੋੜਦਾ ਨਹੀਂ ਜਿਹੜਾ ਆਇਆ ਹੀ ਨਹੀਂ ਉਹਦਾ ਤੋੜਨਾ ਨਾ ਤੋੜਨਾ ਕਿਉਂਕਿ ਉਹਦਾ ਪਤਾ ਹੀ ਬਾਉਂਡਰੀ ਹੈ ਜੀ ਹਾਂ ਜੇਕਰ ਇੱਕ ਉਸਤਤ ਅਨੇਕ ਬਾਉਂਡਰੀ ਕੀ ਹੈ ਬਾਉਂਡਰੀ ਹੁਕਮ ਹੀ ਨਹੀਂ ਤਸਵੀਰ ਉਹਨਾਂ ਕੋ ਭੁਜਿਆ ਦਾ ਪਤਾ ਹੀ ਨਹੀਂ ਹਾਂ ਜੀ ਇਹ ਤਾਂ ਅਨੇਕ ਉਸਤਤ ਅਨੇਕ ਪ੍ਰਕਾਰ ਦੀਏ ਤੇਰੀ ਅਨੇ ਜਿੱਦੇ ਗੁਰਨੇ ਤੇਰੇ ਉਹਨੇ ਉਹਦੀ ਉਸਤਤ ਉਹਦੀ ਉਸਤਤ ਹਾਂ ਗੁਣ ਗੁਣਾਂ ਦਾ ਸਾਧਰ ਸਾਧਰ ਸੁਖ ਸਾਧਰ ਹੈ ਗੁਣਾਂ ਦਾ ਸਾਧਰ ਹੈ ਦੇਖੋ ਸਾਡੇ ਕੋਲ ਔਗਣ ਜਰੂਰ ਨੇ ਸਾਡੇ ਕੋਲ ਔਗਣਾਂ ਦਾ ਸਾਧਰ ਨਹੀਂ ਸਬੂਤ ਹੈ ਦਾ ਸਬੂਤ ਹੈ ਕਿਉਂਕਿ ਅਸੀਂ ਹੈਗੇ ਬਾ ਪਸੰਦਰ ਇਤੋਂ ਜ਼ਿਆਦਾ ਔਗਣ ਹੋਈ ਨਹੀਂ ਸਕਦੇ ਔਗਣ ਪੱਪਸੰਦਰ ਚ ਨੇ ਇਹ ਸਾਰੇ ਔਗਣ ਸਾਡੇ ਛੋਣ ਪੱਪਸੰਦਰ ਤਾਂ ਵੀ ਸਬੂਤ ਨੇ ਪੌਖਾ ਕਰ ਬਿੱਚ ਹੈ ਨਾ ਸੁਖਾ ਕਰਦੇ ਭੌਖਾ ਦਾ ਛੋਟਾ ਹੈ ਔਗਣ ਥੋੜੇ ਨੇ ਗੁਣ ਜਿਆਦਾ ਨੇ ਇਸ ਕਰਕੇ ਔਗਣ ਦੇ ਗੁਣ ਹਾਵੀ ਹੋ ਜਾਂਦੇ ਨੇ ਜੇ ਕੋਈ ਚਾਹੁੰਦਾ ਹੋਵੇ ਵੀ ਮੈਂ ਔਗਣਾ ਔਗਣ ਦੇ ਗੁਣ ਹਾਵੀ ਕਰ ਨੇ ਜੇ ਲੋਭ ਤੇ ਸੰਤੋਖ ਹਾਵੀ ਕਰਨਾ ਤਾਂ ਹੋ ਜੇ ਲੋਭ ਤੇ ਉੱਤੇ ਜੇ ਲੋਭ ਦਾ ਤਿਆਗ ਕਰਨਾ ਹੀ ਕੀਤਾ ਜਾ ਸਕਦਾ ਹੈ ਜੇ ਕ્રોਧ ਦਾ ਤਿਆਗ ਕਰਨਾ ਤਾਂ ਕੀਤਾ ਜਾ ਸਕਦਾ ਹੈ ਜੇ ਮੋਹ ਦਾ ਤਿਆਗ ਕਰਨਾ ਕੀਤਾ ਜਾ ਸਕਦਾ ਪਰ ਜੇ ਨਹੀਂ ਕਰਨਾ ਫਿਰ ਕੁਝ ਵੀ ਨਹੀਂ ਹੋ ਸਕਦਾ ਕਹ ਲਾਣੀ ਫਿਰ ਬਹਾਨੇ ਬਥਰੇ ਫਿਰ ਬਹਾਨੇ ਬਹੁਤ ਨੇ ਨਾ ਅੱਜ ਕਿੱਥੇ ਸੁਵੇਦਾਰੀ ਕਿੱਥੇ ਹੋ ਸਕਦਾ ਫਿਰ ਬਹਾਨੇ ਬਹੁਤ ਨੇ ना ਕਰਦਾ ਮੈਂ ਬਾਹਰ ਮੈਂ ਬਿਠਾ ਦੇਣਾ ਕਰ ਨਾ ਹੋਵੇ ਤਾਂ ਹੋ ਸਕਦਾ ਹੈ ਹਾਂ ਜੇ ਭਾਏ ਇੱਕ ਉਸ ਤੋਂ ਅਨੇਕ ਜੇ ਭਾਏ ਇੱਕ ਹੈ ਉਸ ਤੋਂ ਤਾਂ ਦੇਖਾ ਉਸ ਤੋਂ ਨਹੀਂ ਥੋੜੀ ਹੈ ਉਸ ਤੋਂ ਨਹੀਂ ਖਤਮ ਹੁੰਦੀ ਆਉਣ ਖਤਮ ਹੋ ਜਾਣਗੇ ਉਸ ਤੋਂ ਬਿਮਾਰੀਆਂ ਕਦੋਂ ਹੋਦੀਆਂ ਗਾਈਆਂ ਹੋਦੀਆਂ ਕਦੋਂ ਹਨੇ ਕੰਮ ਰੇਜ ਇਲਾਜ ਕਰਾਉਂਦਾ ਰਹਦੇ ਜਾ ਰਹੇ ਨੇ ਹਸਪਤਾਲਾਂ ਚੋਂ ਗਾਈ ਤਾਂ ਮੁੱਕ ਨਹੀਂ ਰਹੀ ਲਿਮਿਟਡ ਜਿਹੜੀ ਬਿਮਾਰੀ ਹੈ ਲਿਮਟਡ ਉਹ ਘੜ ਨਹੀਂ ਹੈ ਜੇ ਆਪਾਂ ਲਿਮਟਡ ਹੁੰਦੇ ਸਾ ਗੁਰਾਂ ਫਿਰ ਇਹ ਵੱਡਾ ਹੁੰਦਾ ਤਾਂ ਸਾਡਾ ਵੱਡਾ ਤਾਂ ਸੁਖ ਸਾਗਰੇ ਦੇ ਵਿੱਚ ਹੁੰਦਾ। ਜੋਗਣ ਨੂੰ ਤਾਂ ਉਹਨਾਂ ਹਾਰਿਆਂ ਨੇ ਕਾਬੂ ਹੁਦਾ ਫਿਰ ਮੈਸਰ। ਰਾਜ ਕਰਨਾ ਚਾਹੁੰਦੇ ਨੇ ਪਰ ਕਰ ਨਹੀਂ ਸਕਦੇ। ਸਭ ਨੇ ਸ਼ਾਲਾ ਮਾਰੀਆਂ। ਕਰਤਾ ਕਰੇ ਸੋਹੇ। ਉਤਾ ਉਹ ਹੀ ਆ ਜੋ ਚਾਹੁੰਦਾ ਜਿੰਨਾ ਮਰਜ਼ੀ ਧਾਬੇ ਕਰੀ ਜਾਣਾ। اے راجہ جھوٹے جنن مرضی دا کرے یا ہوندا وہی ہے جو چلدا ہے ہاں جی وسط تا نیک وسط وسط تا کیتے نہیں جا موقع ہی نہیں جا سکتی جی واٹ مینک کا اتنا دے دی ਜਿਹੜਾ ਅੰਤ ਨੇ ਉਹਦੀ ਉਸਤ ਕਹਿੰਦਾ ਜਦ ਤੁਸੀਂ ਕਰੋਗੇ ਜੋੰਬੇ ਕੱਲ ਵਾਲੇ ਦਾ ਅੰਤ ਹੈ ਜਿਹਦੀ ਉਸਤ ਕਰ ਰਹਾ ਉਹਦਾ ਅੰਤ ਹੈ ਉਸਤ ਕਰਨ ਵਾਲੇ ਦਾ ਅੰਤ ਹੈ ਨਿਖੜ ਜੀਵਨ ਜਿਹਦੀ ਉਸਤ ਕਰ ਰਹਾ ਉਹ ਇਹ ਤੋਂ ਪਹਿਲਾਂ ਵੀ ਸੀ ਇਹਦੇ ਜਨਮ ਤੋਂ ਇਹਦੇ ਸ਼ਰੂ ਤੋਂ ਬਾਅਦ ਵੀ ਰਹੇ ਪਰ ਇਹ ਸਮਾਂ ਕਰ ਦੂੰਗਾ ਜਿਹੜੇ ਗੁਰਨਾਮ ਗੁਰਨੰਕਾਰ ਕਹਿਣ ਵਾਲੇ ਨੇ ਉਹਨਾਂ ਨੂੰ ਹੋਸ਼ ਹੋਣੀ ਚਾਹੀਦੀ ਹੈ ਵੀ ਗੱਲ ਕੀ ਹੈ ਅਸਲ ਤੇ ਬਿਤਾ ਉਹਨਾਂ ਨੇ ਬਿਗੇ ਇਹ ਥੁੜਾ ਦਵਾ ਇਹ ਥੁਣੇ ਗਰੇ ਹੰਕਾਰ ਵੈਲਾ ਕਰਦਾ ਸਖੀ ਸਿੱਖ ਬਹੁਤ ਜ਼ਿਆਦਾ ਹੰਕਾਰੀ ਹੋ ਗਿਆ ਮੂਰਖ ਹੋ ਗਿਆ ਅਰੇ ਮੂਰਖ ਮੂਰਖ ਬਣ ਲੱਗਦਾ ਭਣੀ ਜੇਬਾ ਇੱਕ ਉਸਤਤ ਅਨੇਕ ਸਤਪੁਰਖ ਪੂਰਨ ਬਵੇ ਜੇਬਾ ਇੱਕ ਉਸਤਤ ਅਨੇਕ ਸਤਪੁਰਖ ਪੂਰਨ ਬਵੇ ਤੇ ਕੱਲ ਅਲੱਗ ਹੈ ਜਿਹੜਾ ਸਤਪੁਰਖ ਹੈ ਜਿਹੜਾ ਸਤਪੁਰਖ ਜਾਣੇ ਨੇ ਆਪਾਂ ਆਪੇ ਜਾਣੇ ਉਹ ਜਾਣਿਆ ਕੀ ਹੈ ਸਤਗੁਰ ਤੇ ਇਸ ਕਾਲੋਂ ਸਤਗੁਰ ਵੀ ਆਪੇ ਹੈ ਸਤਪੁਰਖ ਜਿਹੜੇ ਜਾਣੇ ਸਤਪੁਰਖ ਕੀ ਜਾਣੇ ਆਤਮ ਦਰਸ਼ਨੇ ਕੀਤਾ ਉਹਨੇ ਹਾਉਦਾ ਨਾ ਸਤਿਗੁਰੂ ਦਾ ਜਾਂ ਸਤਿਪੁਰਖ ਚ ਜਾਣਿਆ ਸਤਿਗੁਰੂ ਉਹਨੂੰ ਸਤਿਗੁਰ ਕਿਹਾ ਜਾ ਸਕਦਾ ਸੱਚ ਦਾ ਗਿਆਨ ਹੈ ਉਹਦੇ ਕੋਲ ਸਤਿਗੁਰੂ ਨਹੀਂ ਕਿਹਾ ਜਾ ਸਕਦਾ ਆ ਗੁਰੂ ਨੇ ਨਾਲ ਲਾਇਆ ਜਾ ਸਤਿਗੁਰ ਕਿਹਾ ਜਾ ਸਕਦਾ ਸਤ ਕੇ ਜਨਮ ਹੈ ਗਵਨ ਮਟਾਇਆ ਸਤ ਗੁਰੂ ਦਾ ਜਨਮ ਹੋਇਆ ਹੀ ਨਹੀਂ ਕਦੇ ਉਹਦਾ ਜਨਮ ਤਾਂ ਹੁੰਦਾ ਹੀ ਉਹਦਾ ਜਨਮ ਨਹੀਂ ਹੁੰਦਾ ਸਾਇਦ ਵਿੱਚ ਆਉਂਦਾ ਇਹ ਸੁਣਨ ਚਾਉਂਦਾ ਹੈ ਉਹ ਗੁਪਤ ਪ੍ਰਗਟੇ जो ਹੈ ਜੇ ਸੁਣਨ ਸਮਾਧ ਲਗਾਏਗਾ ਤਾਂ ਗੁਪਤ ਹੈ ਜੇ ਸਾਇਦ ਸੱਚਾ ਸਮਝੇ ਸਾਇਦ ਜੋ ਪਾਇਆ ਫਿਰ ਪ੍ਰਗਟ ਹੈ ਉਹ ਜਗ ਪੈਦਾ ਕਰਦਾ ਹੈ ਗੁਰੂ ਤੇ ਜਗ तो फिर गुरु پیدا کینا جے تا گرو تو پھر پیدا ہو گیا پیدا تا نال چیز ہوگی پھر پیدا کینا کوئی تا گرو یہ ادمی گرو ہے پیدا کرنے والے تو بڑا چاہیے نا جاتا جی اے کہ ہے خدانے اے منے کہ ब्रह्मा بڑا کہ جس ಉಪایا ब्रह्मा وہی صدقو رہا اصل چن جنو ब्रह्मा کہے وہی ਜੇ ਬ੍ਰਹਮਾ ਵਾਕਈ ਹੈ ਉਹ ਤੇ ਬਾਣੀ ਬ੍ਰਹਮਾ ਹੀ ਕਹਿਆ ਬੇਤਰ ਬਾਣੀ ਬ੍ਰਹਮਾ ਬੇਤਰ ਨੇ ਸਾਰੇ ਬ੍ਰਹਮਾ ਦਾ ਉਤਾਰ ਨੇ ਜਿਹੜੇ ਸਾਰੇ ਭਗਤ ਨੇ ਬ੍ਰਹਮਾ ਦਾ ਉਤਾਰਿਆ ਹੁੰਦੇ ਨੇ ਬਾਣੀ ਬ੍ਰਹਮਾ ਬੇਤਰ ਬਦੜੋ ਪਾਉਂਦੇ ਜਾਇਆ ਬਰਲਾ ਬ੍ਰਹਮਾ ਵੱਡਾ ਗਿਆਨ ਹੋ ਪਾਇਆ ਜਿਹਨੇ ਪੈਦਾ ਕੀਤਾ ਉਹ ਵੱਡਾ ਕਿ ਬ੍ਰਹਮਾ ਵੱਡਾ ਫੇਰ ਅਸੀਂ ਕਿਵੇਂ ਕਿਸੇ ਹੱਦ ਤੇ ਕਹਿ ਸਕਦੇ ਸੀ ਵੱਡੇ ਛਾਤਾਂ ਲੋਕ ਤੇ ਛਰਾਤੀ ਤੇ ਜਿਨ੍ਹਾਂ ਨੇ ਵੱਡੇ ਵੱਡੇ ਪਿੱਛੇ ਪਖੰਡਵਾਦ ਚਲਦੇ ਨੇ ਵੱਡੇ ਵੱਡੇ ਢੇਰੇ ਚਲਦੇ ਨੇ ਗੁਰੂ ਦੇ ਨਾਂ ਉਤੇ ਉਹ ਮੰਨਣ ਨੂੰ ਤਿਆਰ ਨਹੀਂ ਉਹਨਾਂ ਦਾ ਸਾਰਾ ਕੁਝ ਖਤਮ ਹੁੰਦਾ ਬੁਰਖੰਦ ਘੋਰ ਬਣਾਏ ਨੇ ਲੋਕ ਉਹ ਨਹੀਂ ਚਾਹੁੰਦੇ ਪਤਾ ਲੱਗਿਆ ਲੋਕਾਂ ਨੂੰ ਉਹਨਾਂ ਦੀ ਚੌਧਰ ਨਹੀਂ ਰਹਿਣੀ ਚਾਹੀਦੀ ਉਸ ਦਾ ਨਾਇਕ ਸਤਪੁਰਖ ਦਾ ਵਿਵੇਕ ਸਤਪੁਰਖ ਵੀ ਹੈ ਉਹ ਪੂਰਨ ਬਵੇਕ ਵੀ ਹੈ ਬਵੇਕ ਵੀ भी ਉਹਦੇ ਚ ਕੋਈ ਪਾਉ ਨਹੀਂ ਸਤਪੁਰਖ ਵੀ ਹੈ ਬਵੇਕ ਵੀ ਪੂਰਾ ਬਵੇਕ ਵਿੱਚ ਵੀ ਕੋਈ ਕਮੀ ਨਹੀਂ ਇਹ ਮਾਨਵ ਚਤਤੀ ਇੱਕ ਤਾਂ ਕੋਈ ਕਮੀ ਨਹੀਂ ਸਭ बुरे da bhala karda hai koi bhi shanka wali नहीं है. hai sapna prem karda hai koi shanka नहीं है. nahi hai eh purn vivek di shadi hai sab ko mere tham aapad ke ना na koi bahri na hai bagana eh vivek puru di shartaan hai eh ta hai zarur ਪਰੇ ਦੀ ਆਪਣੀ ਉਸਤਤਾ ਕੋਈ ਨਹੀਂ ਨਾ ਇਹ ਤਾਂ ਉਸਤ ਕਰਦਾ ਹੈ। ਕੋਊਂ ਬਿਵੇਕਤਾ ਉਸਤ ਕਰੇ ਰਿਹਾ ਹੈ। ਆਪਣੀ ਉਸਤਤਾ ਨਹੀਂ ਕੋਈ ਨਹੀਂ। ਆਪ ਤਾਂ ਆਪਣੇ ਆਪ ਨੂੰ ਬਡਾ ਲੀ ਗਏ ਆਪ ਦਾ ਹੀ ਨੋ ਤਾਂ ਕਿ ਵੀ ਗਿਆਨ ਦਾ ਗਿਆਨ ਦਾ ਹੀ ਨਾ ਇੱਕ ਬਿਵੇਕ ਉਹ ਗਿਆਨ ਹੈ। ਆ ਕੇ ਕੁਝ ਵੀ ਸਮਝਣ ਨਹੀਂ ਆ ਜਾਂਦਾ। ਕੁਝ ਵੀ ਸਮਝਣ ਨੂੰ ਨਹੀਂ ਰਹਿ ਜਾਂਦਾ ਸੰਸਾਰ ਵਿੱਚ ਕੁਝ ਵੀ ਕੋਈ ਸਵਾਲ ਨਹੀਂ ਹੁੰਦਾ ਰਹਿੰਦਾ ਸੰਸਾਰ ਆਤਮਾ ਦੇ ਪ੍ਰਤੀ ਕੋਈ ਸਵਾਲ ਨਹੀਂ ਰਹਿੰਦਾ ਯਾਨੀ ਉਹ ਜਿਹੜਾ ਉਹਦਾ ਵਿਸ਼ਾ ਹੈ ਸਾਡਾ ਉਹਦੇ ਪ੍ਰਤੀ ਉਹਨੂੰ ਕੋਈ ਸ਼ੰਕਾ ਨਹੀਂ ਹੈ ਵਿਸ਼ੇ ਸਾਡਾ ਛੋਟਾ ਜਿਹਾ ਵਿਸ਼ਾ ਸਾਡਾ ਹਾਂ ਸੰਸਾਰ ਅਸੀਂ ਥੋੜੀ ਬਣਾਇਆ ਸੰਸਾਰ ਜਿਨੇ ਪੜਾਇਆ ਉਹਦਾ ਵਿਸ਼ਾ ਹੋ ਜੇ ਉਹ ਵੀ ਸਾਨੂੰ ਪਤਾ ਫਿਰ ਅਸੀਂ ਬੇਅਰਥ ਕੰਮ ਕਹਿ ਸਕਦੇ ਹਾਂ ਜੇ ਉਹ ਵੀ ਸਾਨੂੰ ਪਤਾ ਵੀ ਬੇਅਰਥ ਕੰਮ ਆਇਆ ਫਿਰ ਮੈਂ ਮੂਰਖੀ ਕਿਹਦੇ ਤੋਂ ਕਬਾਤ ਆ ਕਹਿ ਸਕਦਾ ਹਾਂ ਕੋਰ ਕੋਈ ਅਪਰਾਧ ਨਹੀਂ ਹੈ ਸਾਜਾ ਤੋਂ ਕੋਣਾ ਅਪਰਾਧ ਦਿੱਤ ਕੋਣਾ ਅਪਰਾਧ ਸਾਕਤ ਬਿੱਦਕ ਦਾ ਦੁਸ਼ਟ ਸਾਕਤ ਬਿੱਦਕ ਦੁਸ਼ਟ ਖਨਵਾਏ ਵਿਦਾਰੀ ਹਦ ਵਿਦਾਰੀ ਇਹ ਤਾਂ ਹੈਗਾ ਅਪਰਾਧੀ ਜਿਹੜਾ ਹੈਗਾ ਮੂਰਖ ਉਹ ਅਪਰਾਧੀ ਨਹੀਂ ਹੁੰਦਾ ਮੂਰਖ ਤਾਂ ਬਣਾਇਆ ਗਿਆ ਕਿਸੇ ਨੇ ਬਣਾਇਆ ਉਹਦਾ ਕਿਸੇ ਨੇ ਬਣਾਇਆ ਮੂਰਖ ਦਾ ਛੋਟਾ ਬੱਚਾ ਦਾ ਛੋਟੇ ਬੱਚੇ ਤੋਂ ਹੀ ਮੂਰਖ ਬਣਾਤਾ ਸੀ ਲਿਜਾ ਕੇ ਮੂਰਖੀ ਮੂਰੇ ਤਾਂ ਉਹ ਛੋਟਾ ਸੀ ਉਦੋਂ ਹੀ ਮੂਰਖ ਤਾਂ ਉਦੋਂ ਬਣਾ ਦਿੱਤਾ ਮੂਰਖ ਕੋਲੇ ਹੋ ਗੁਰੂ ਜੀ ਦਾ ਕਹਿ ਮੈਂ ਮੂਰਖੀ ਕਿਹ ਤੱਕ ਬਾਤ ਹੈ ਉਹ ਮੈਂ ਤਾਂ ਮੂਰਖ ਹੈ ਮੈਨੂੰ ਕੋਈ ਗੱਲ ਨਹੀਂ ਕੋਟ ਅਪਰਾਧੀ ਕਰਿਆ ਦੇਤਾ ਅਪਰਾਧੇ ਵੀ ਕਰ ਜਾਂਦੇ ਆ ਅਪਰਾਧੀ ਜਿਆਦਾ ਖਤਰਨਾਕ ਹੈ ਕੋਟ ਅਪਰਾਧੀ ਕਰਿਆ ਦੇ ਕੋਟ ਅਪਰਾਧੀ ਕਰਿਆ ਦੇ ਕਾਨੂੰਨ ਦੇ ਅੰਦਰ ਕਬਰਦੀ ਵੀ ਨੇ ਹਾਂ ਜਿਹੜੇ ਅਰਥ ਦੇ ਅਨਰਥ ਕਰਦੇ ਨੇ ਉਹ ਅਪਰਾਧੀ ਹੋਣੇ ਜਿਹੜੇ ਪੇਸ਼ਾਵਰ ਨੇ ਕਿਹਾ ਸੀ ਸੱਚ ਨੂੰ ਪ੍ਰਗਟ ਨਹੀਂ ਹੋਣ ਦੇਣਾ ਉਜਤਾਂ ਗੱਲ ਦੇ ਨੇ ਉਹ ਅਪਰਾਧੀ ਨੇ ਸਾਰੇ ਇਹ ਲੋਕ ਮੱਖਣ ਦੇ ਵਾਲਾ ਗੁਰੂ ਘਰ ਇੱਧਰ ਬਾਹਰ ਇਹਨਾਂ ਨੂੰ ਖੜ ਕੇ ਰੱਖਦਾ ਸੀ ਇਹ ਗੱਲਾਂ ਜਿਹੜੀਆਂ ਆਈਆਂ ਹੋਈਆਂ ਨੇ ਇਹ ਪ੍ਰਚਾਰ ਹੈ त्याग ਦਿੱਤਾ ਕਿ ਅਪਰਾਧੀਆਂ ਆਪੜੇ ਨਾ ਅਪਰਾਧੀਆਂ ਨੇ ਹਤਾ ਪ੍ਰਚਾਰ ਹੈ ਅਪਰਾਧੀਆਂ ਨੇ ਹਤੇ ਚ ਪ੍ਰਚਾਰ ਆ ਕਿ ਉਹ ਇਹਨਾਂ ਦਾ ਪ੍ਰਚਾਰ ਕਰਦੇ ਜੋ ਉਹ ਕਹਤੇ ਕਰਦੇ ਪ੍ਰਚਾਰ ਖੋਦ ਅਪਰਾਧੀ ਕਰ ਰਹੇ ਨੇ ਅਪਰਾਧੀਆਂ ਦੇ ਹਤੇ ਧਰਮ ਯਾਦਾ ਅਪਰਾਧੀਆਂ ਤੋਂ ਬਿਨਾ ਦੂਏ ਵਾ ਤੇ ਧਰਮੋਂ ਤਾਂ ਫਿਰ ਕਿਸਮਾਨ ਬਹਿ ਜਾਂਦਾ ਹੈ ਤਾਂ ਮਧਾਲੀ ਪਾ ਦਿੰਦਾ ਕਬੀਰ ਆ ਕੇ ਫੇਰ ਤਾਂ ਨਾਨਕ ਨੇ ਜਾ ਧਿਆਈ ਜਾ ਫੇਰ ਤਾਂ ਖਲਮਲੀ ਮੱਚੀ ਦੋਸਾਂ ਦੀ ਖਲਬਲੀ ਵਿੱਚ ਆਉਂਦੀ ਸਾਰੇ ਮੱਕੇ ਦਾ ਘੁਮਕੇ ਖਲਬਲੀ ਜਦ ਪੈਦਾ ਹੁੰਦੀ ਹੈ ਜਦ ਕੋਈ ਉਹ ਬੇਟੀ ਆ ਕੇ ਪੈਦਾ ਹੋ ਕੇ ਗਲ ਕਰਦਾ ਫਿਰ ਖਲਬਲੀ ਪੈਦਾ ਹੋ ਜਾਂਦੀ ਹੈ ਖਲਬਲੀ ਜੇਕਰ ਇੱਕ ਉਸਤ ਪੂਰਨ ਵਿਵੇਕ ਸਤਪੁਰਖ ਪੂਰਨ ਵਿਵੇਕ ਸਤਪੁਰਖ ਵੀ ਹੈ ਉਹ ਸਤਪੁਰਖ ਜੇ ਧਿਆਨ ਸਤਪੁਰਖ ਕੀ ਹੁੰਦਾ ਸਤਿਗੁਰ ਕਾ अपना आप ਹੀ ਇੱਕ ਹੋ ਕੇ ਹੋ ਗਿਆ ਆਪਣੇ ਆਪ ਨੂੰ ਜਾਣਿਆ ਜੋ ਇਹ ਕੋ ਕੇ ਹੋ ਗਿਆ ਉਹ ਆਪਣਾ ਆਪ ਹੀ ਆ ਹੋ ਅੰਦਰੋਂ ਦੇ ਸ਼ਬਦ ਪੈਦਾ ਹੁੰਦਾ ਸ਼ਬਦ ਉਹਨੇ ਸੰਪਰਕ ਦੇਖ ਲਿਆ ਨਾ ਹਾਂਜੀ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਵਾਣੀ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਜਿੱਤੇ ਤੱਕ ਇਹਦਾ ਨਾਮ ਜਪਣਾ ਵਿਚਾਰ ਨਿਕਾਲਣਾ ਬੁਤਰਪਾੜੇ ਬੁਤਰ ਵਿਚਾਰਨ ਕਰਨੇ ਪਾਠ ਕਰਦੇ ਇਹਦਾ ਵਿਸ਼ਾ ਧਰਮ ਧਰਮ ਦੇ ਵਿੱਚ ਇਹੀ ਰੱਖਿਆ ਹੋਇਆ ਹੈ ਪਰ ਉਹਦਾ ਗੁਰੂ ਨਾਨਕ ਨੇ ਕਹੇ ਤਾਂ ਸੀ ਉਹ ਕੀ ਬੋਲਣ ਬੋਲੀਆ ਜਿਤ ਸਭ ਧਰੇ ਪਿਆਰ ਜਵਾਬ ਨਹੀਂ ਦਿੱਤਾ ਸਵਾਲ ਉੱਥੇ ਸਵਾਲ ਰੜਾ ਕੀਤਾ ਜਵਾਬ ਜਵਾਬ ਇੱਥੇ ਆ ਗਿਆ ਹੂੰ ਬੋਲਣ ਨੂੰ ਕੋਈ ਤੇ ਸਵਾਲ ਸੀ ਸਿਰਫ ਜਵਾਬ ਨਹੀਂ ਦਿੱਤਾ ਉਸੇ ਕਿਤੇ ਵੀ की ਉਹ ਕੀ ਬੋਲਣ ਬੋਲੀ ਹੈ ਕੀ ਬੋਲੀ ਹੈ ਜੇ ਸੁਣਦੇ ਨੇ ਪਿਆਰ ਇਹਦਾ ਬੰਦਾ ਕੁਝ ਸਾਡੇ ਕੋ ਬੋਲਣ ਨੂੰ ਨਹੀਂ ਹੈ ਇਹ ਬੋਲਣ ਦਾ ਵਿਸ਼ਾ ਨਹੀਂ ਚਾਹਣ ਦਾ ਵਿਸ਼ਾ ਹੈ ਇਹ ਇੱਛਾ ਦਾ ਵਿਸ਼ਾ ਹੈ ਚਾਹਣ ਦਾ ਵਿਸ਼ਾ ਬੋਲਣ ਦਾ ਵਿਸ਼ਾ ਨਹੀਂ ਹੈ ਜੋ ਮੂਦ ਵਿੱਚ ਹੋ ਕੌਣ ਬੋਲਣਾ ਮੋਝ ਪਰ ਪ੍ਰਾਣੀ ਫੇਰ ਵੀ ਬੋਲਣ ਤੇ ਨਹੀਂ ਖੜਿਆ ਉਚਾਲਣੇ ਕਰਦਾ ਵੈਗੁਰੂ ਵੈਗੁਰੂ ਕਰੀ ਜਾਂਦਾ ਬਹੁਤ ਉੱਚੀ ਚੀਂ ਹੋਰ ਬਹੁਤ ਕੁਛ ਕਰਦਾ ਕੋਈ ਪਾਠ ਪੜਦਾ ਸਪੀਕਰ ਲਾ ਕੇ ਪੜਦਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਕੋਈ ਸ਼ਬਦ ਦੇਤਾ ਵੀ ਤੋ ਆ ਰੜੀ ਜਾ ਕੋਣ ਹੈ ਇਹ ਤਾਂ ਪਿੱਛੇ ਹੋ ਹੀ ਰਿਹਾ ਸੀ ਆ ਕੀ ਲੋੜ ਸੀ ਲਿਖਣ ਸੀ ਇਹ ਤਾਂ ਪਿੱਛੇ ਕਰੇ ਰਹੇ ਸੀ ਆ ਲਿਖਣ ਦੀ ਕੀ ਲੋੜ ਪਈ ਸੀ ਉਹ ਪਾਠ ਪੜਿਓਰ ਬੇਦ ਵਿਚਾਰੇ ਉਮੀਦ ਆਪਨ ਮੇ ਬਾਸਾ ਜੇ ਲਿਖਿਆ ਹੋਇਆ ਪੜਿਆ ਨਾ ਹੀ ਭੇਦ ਪੁੱਝਿਆ ਆਪ ਆਪਣਾ ਇਹ ਵੀ ਤਾਂ ਵਿਚਿਆ ਹੋਇਆ ਸਾਡੇ ਪੜਦੇ ਆਂ ਬੋਲਦੇ ਆਂ ਨਾ ਅਖੜ ਪਾਠਾ ਦੀ ਲੜੀਆਂ ਖੀਰ ਬੋਲਦੇ ਆਂ की ਫਿਰ ਇਹਦੇ ਨਾਲ ਕੀ ਮਿਲ ਜੂਗਾ ਸਿਰ ਮ ਬਾਣੀ ਯਾਦ ਹੋ ਜੂਗੀ ਬਾਣੀ ਯਾਦ ਸੰਤਾਂ ਨੇ ਉਹਨਾਂ ਦੇ ਕਬਰਾਂ ਜ਼ਰੂਰ ਖੋਦੀਆਂ ਗੁਰਬਾਨੇ ਲੋਕਾਂ ਨੂੰ ਦੇ ਸਮਝਾਏ ਸੋਲਿ ਰੋਜ ਅਖੰਡ ਪਾਠ ਹੁੰਦੇ ਨੇ ਤੇ ਜੇ ਹੁਣ ਸਮਝਾ ਦਾਂਗੇ ਕਬਰਾਂ ਨੂੰ ਦੀ ਖੋਦेंगी ਕੌਣ ਪੜਾਉਂਦਾ ਸਾਰੀ ਜੁਨੀਆ ਨੂੰ ਇਹ ਵੀ ਠੀਕ ਹੀ ਹੋਇਆ ਉਹਨਾਂ ਦੇ ਖਬਰ ਕਬਰ ਉਹਨਾਂ ਦੀ ਆਖਰੀ ਫੁਟਬਾਲ ਬਰਮੇਸ਼ਾ ਉਹਨਾਂ ਸੰਤਾਂ ਦੇ ਉਹਨਾਂ ਦੀਆਂ ਕਬਰਾਂ ਖੋਦਵਾਲੀਆਂ ਰਸੋ ਲਾਲ करते रहे, ਜਾਏ ਇਹ ਨਹੀਂ ਪਤਾ ਵੀ ਕੱਲ ਨੂੰ ਹੋਊਗਾ ਕੀ ਇਹਦਾ ਆਖਦਾ ਜੇ ਬਾਣੀ ਆਧੋਰੀ ਤਾਂ ਲੋਕਾਂ ਜਗਿਆ ਸਾ ਵੀ ਇਹ ਉਜਾ ਦੁਰਦੀ ਸਾਰੇ ਤਾਂ ਬੰਦੇ ਦੇਖੋ ਮੂਰਖ ਮੂਰਖ ਜਰੂਰ ਨੇ ਹੈ ਬੇਈਮਾਨ ਨੇ ਸਾਰੇ ਬਗਲਕ ਬੇਈਮਾਨ ਨਹੀਂ ਹੈ ਮੂਰਖ ਜਰੂਰ ਨੇ ਮੂਰਖ ਬਣਾਏ ਹੋਏ ਨੇ ਲੋਟੇ ਛਾਤਰਾ ਨੇ ਕਹਦਾ ਇਹ ਮੈਨੂੰ ਤਾਂ ਗਲਤੀ ਦੱਸ ਤਾਣ ਰਾ ਗਲਤੀ ਦਾ ਗਲਤ ਰਾਹ ਚਲੇ ਗਿਆ ਕਰਤੀ ਨਾ ਆ ਗਿਆ ਬਾਰਡਰ ਵੀ ਪਾਰ ਕਰ ਜਾਂਦਾ ਮੈਂ ਤਾਂ ਗਲਤੀ ਨਾਲ ਪਾਕਿਸਤਾਨ ਦਾ ਬੰਦਾ ਹਿੰਦੁਸਤਾਨ ਜਾ ਕੇ ਹਿੰਦੁਸਤਾਨ ਦਾ ਪਾ ਉਹ ਕਹਿੰਦੇ ਕੋਈ ਮੋੜ ਜਾਣਾ ਚਲਾ ਗਿਆ ਕਾਹੂ ਪਹੁੰਚੇ ਪ੍ਰਾਣੀ ਪ੍ਰਭ ਨਿਰਵਾਣੀ ਕਿਉਂਕਿ ਪ੍ਰਭ ਜਿਹੜਾ ਆਗਮ ਅਗੋਚਰ ਹੈ ਜੇ ਕਮ ਕੋ ਚੰਦੂ ਨਹੀਂ ਮੰਨੇ ਆ ਤਾਂ ਦੂੰ ਇੱਕ ਦਾਰ ਹੈ ਮੋਲਦਾ ਰਿਹਾ ਤੂੰ ਤਾਂ ਮੂਰ ਸਿੱਧੇ ਸਾਹਮਣੇ ਜਾ ਕੇ ਪਾਠ ਕਰਦਾ ਤੂੰ ਤਾਂ ਗੁਰੂ ਰਾਮ ਸਾਹਿਬ ਦੇ ਸਾਹਮਣੇ ਪਾਠ ਕਰਦਾ ਉੱਤੇ ਗੁੱਟ ਕੇ ਲੱਗੇ ਬੈਠ ਗੁਰੂ ਦਖਾਵੇ ਵਾਲੇ ਲੋਕ ਨਾ ਸਾਰੇ ਇਹ ਜੋ ਕੁਛੇ ਕਰਦੇ ਨੇ ਧਰਮ ਕੋਈ ਦਿਖਾਵੇ ਦਾ ਵਿਸ਼ਾ ਹੈ ਦਿਖਾਵੇ ਦਾ ਵਿਸ਼ਾ ਬਣਾ ਲਿਆ ਸਰਬਗੋਚਰ ਪਰਮ ਨਿਰਵਾਣੀ ਪ੍ਰਾਵ ਨੂੰ ਬੋਲ ਕੇ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਉਹ ਤਾਂ ਬਿਨਾ ਉਹ ਤਾਂ ਇੱਛਾ ਪ੍ਰਗਟ ਹੋ ਗਈ ਸਾਡੀ ਜੇ ਸਾਡੇ ਅੰਦਰ ਭੁੱਖਾ ਹੈ ਸੱਚੇ ਨਾਮ ਕੀ ਲੱਗਾ ਭੁੱਖ ਕਿ ਭੁੱਖ ਲੱਗਿਆਈ ਸਾਡੇ ਸੁਣਨਾ ਆਉਂਦੀ ਭੁੱਖ ਦੀ ਗੱਲ ਹੈ ਭੁੱਖ ਤੇ ਬੋਲਣ ਦੀ ਲੋੜ ਹੈ ਭੁੱਖ ਬੋਲਦੀ ਅੰਦਰ ਜਦ ਭੁੱਖ ਬੋਲਦੀ ਹੈ ਤਾਂ ਬੋਲਦਾ ਵੀ ਰੋਟੀ ਚਾਹੀਦੀ ਹੈ ਉਹਦੀ ਅੰਦਰ ਭੁੱਖ ਹੈ ਭੁੱਖ ਬੋਲੇ ਤੇ ਤੂੰ ਨਾ ਬੋਲ ਤੈਨੂੰ ਬੋਲਣ ਦੀ ਲੋੜ ਨਹੀਂ ਭੁੱਖ ਬੋਲੇ ਅੰਦਰੋਂ ਉਹ ਕਹੈ ਨੇ ਉਹ ਬੋਲਦਾ ਜੇ ਭੁੱਖਾ ਹੈ ਨਹੀਂ ਮਨ ਵਿੱਚ ਭੁੱਖਾ ਹੈ ਨਹੀਂ ਮੂੰਹ ਬੋਲਦੇ ਨੇ ਜੇਨ ਮਨ ਹੋਰ ਮੁੱਖ ਹੋਵੇ ਮਨ ਹੋਰ ਕੀ ਮਨ ਚ ਦਾ ਭੁੱਖ ਹੈ ਨਹੀਂ ਪ੍ਰੀਤ ਮੁੱਖੋਂ ਗੰਢ ਮੁੱਖੋਂ ਮੇਰੀ ਬੜੀ ਪਰੀਤ ਹੈ ਮਾਧਵ ਪ੍ਰਭਾਣੀ ਨੂੰ ਬੜਾ ਮੁਰੂ ਨੂੰ ਮੰਦ ਉਹ ਤਾਂ ਇਹ ਕਹਿੰਦੇ ਨੇ ਮਨ ਚ ਆ ਨਹੀਂ ਗੱਲ ਜੇ ਮਨ ਹੋਵੇ ਤਾਂ ਮੁੱਖੋਂ ਬੋਲਣ ਦੀ ਲੋੜ ਨਹੀਂ ਹੈ ਮੁੱਖੋਂ ਬੋਲਣ ਦੀ ਲੋੜ ਉਹ ਨੂੰ ਆ ਜਿਹਦਾ ਮਨ ਵਿੱਚ ਹੈ ਦੀ لوگاں نوں دسن واسطے پروپیگنڈا کرن واسطے تاکہ لوگ سمجھن اے بڑے سکھ نہیں میں سکھ جے بندیاں نوں ستکار کمیٹیاں نے اے کون ہے آفتہ سدکار ہے ہی نہیں انہاں نے آپنے کردے ستا ہا نہیں نراہ ہار دروائر sukh دائی ਇਹਨੂੰ ਉਹ ਸਤਕਾਰ ਮੰਨਦੇ ਨੇ ਨਾ ਉਹ ਦੁਨਿਆਵੀ ਲੋਕਾਂ ਦੀ ਜਿਹਾ ਜਿ ਸਤਕਾਰ ਹੈ ਸੰਸਾਰੀ ਸਤਕਾਰ ਹੈ ਭਗਤਾਂ ਦਾ ਸਤਕਾਰ ਹੈ ਇਹਦੇ ਭਗਤਾ ਤੇ ਸਾਰੇ ਉਹ ਤਾਂ ਸੰਸਾਰੀ ਆਦਮੀ ਨੇ ਸਤਕਾਰ ਸਤਕਾਰ ਵੀ ਉਹਨਾਂ ਦਾ ਸੰਸਾਰੀ ਗੁਰਬਾਨੀ ਵਾਲਾ ਸਤਕਾਰ ਨਹੀਂ ਹੈ ਗੁਰੂ ਵਾਲਾ ਸਤਕਾਰ ਨਹੀਂ ਹੈ ਗੁਰੂ ਵਾਲਾ ਸਤਕਾਰ ਕੀ ਹੈ ਬਿਸਬਿ ਸਵੇਗ ਗੁਰ ਕਾਮਨ ਇਹ ਸਤਕਾਰ ਕਰਕੇ ਦਿਖਾਉਣੇ ਇਸ ਵਸਵੇਕ ਗੁਰ ਕਮਨ ਮਾਨਾ ਇਜ਼ਤ ਘਰ ਇਸ ਵਸਵੇਕ ਕੁਰਬਾਨੀ ਦੀ ਗੱਤ ਕਰੋ ਫੇਰ ਸਰਕਾਰ ਵਰਨਾ ਹੈ ਨਹੀਂ ਸੋ ਸੇਵਕ ਪਰਮੇਸ਼ਰ ਦੀ ਗੱਤ ਜਾਨਾ ਹੈ ਜੇ ਤੁਸੀਂ ਕਰਦੇ ਹੋ ਵੀ ਇਸ ਵੇਸੇ ਪਰਮੇਸ਼ਰ ਦੀ ਗੱਦੀ ਦੱਸੋ ਫਿਰ ਕੀ ਹੈ ਸਪੱਸ਼ਟ ਕਰਕੇ ਦੱਸੋ ਉਹ ਵੀ ਹੈ ਨਹੀਂ ਹਾਂ ਜਿਹੜਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਚੀਜ਼ ਵੀ ਕਿਨੇ ਨਾ ਪਾਈ ਤੇਰਾ ਹਾਰ ਮਿਰ ਰਹਿਰ ਸੁਖਾਈ ਉਹ ਤੇਰਾ ਹਾਰ ਅਸਲ ਰਹਿਚ ਜਦੋਂ ਤੁਮ ਗਿਆਨੀ ਦਾ ਭੋਜਨ ਗਿਆਨ ਹੋ ਜਾਂਦਾ ਫਿਰ ਅਸਲ ਨਿਰਾਹਾਰ ਹੋ ਜਾਂਦਾ ਹੈ ਸਰੀਰ ਨਾਲ ਜੁੜਿਆ ਰਹਿੰਦਾ ਜਦ ਅਸੀਂ ਕਹਿੰਦੇ ਆ ਭੇਦਣਾ ਜਾਣ ਨੂੰ ਮਾਨਸ ਦੇਹਾ ਉਦੋਂ ਇਹਨੂੰ ਨਿਰਾਹਾਰ ਕਿਹਾ ਜਾ ਸਕਦਾ ਜਦੋਂ ਅਸੀਂ ਕਹਿੰਦੇ ਆ ਨਾ ਪੇਰਾਂ ਜਾ ਹਰ ਕਾਲ ਸੇ ਉੱਪਰ ਸੋਹਰ ਜੇ ਹਾਂ ਪੇਰਾਂ ਜਾਣਾ ਮਾਰ ਕੋਣ ਹੁੰਦੇ ਹਾਂ ਫਿਰ ਮੇਰਾ ਹਾਰ ਕਿਹਾ ਜਾ ਸਕਦਾ ਇਹਨੂੰ ਕਿਉਂ ਬ੍ਰਹਮ ਕਾ है, ਗੱਲ ਕੋ ਜਨ ਗਿਆਨ ਹੈ ਉਹ ਨਿਹਾਰ ਦਾ ਕੋ ਹੋ ਜਦੂ ਮਾਇਆ ਜਿਤੇ ਮਾਇਆ ਦਾ ਕੋ ਹੋ ਜਨ ਨਾ ਬਾਲ ਨੂੰ ਮੈਂ ਸੇਵੇ ਦਰਖੜਾ ਉੱਥੇ ਨਰਾਹਾਲ ਦੀਏ ਉੱਥੇ ਪੌਣਾ ਹਾਰੀ ਹੈ ਉੱਥੇ ਪੌਣਾ ਹਾਰੀ ਕਹਿੰਦਾ ਨਰਾਹਾਲੀ ਨਰਾਹਾਲੀ ਕਹਿੰਦਾ ਨਰਾਹਾਲੀ ਨਹੀਂ ਗਿਆ ਨਰਾਹਾਲੀ ਨਹੀਂ ਹੈ ਜਿੰਨਾ ਚਿਰ ਸਾਹ ਲੈਣ ਦਾ ਸਾਹ ਲੈਣ ਦੀ ਇੱਛਾ ਆਪਣੇ ਡਿਊਟੀ ਸਮਝਦਾ ਸਾਹ ਲੈਣ ਦੀ ਆਪਣੇ ਭਾਣੇ ਦੀ ਗੱਲ ਕਰਦਾ ਸਾਹ ਲੈਣ ਦੀ ਉਹ ਨਾ ਜਲ ਨਰਾਹਰੀ ਦੀ ਜਿਆਦਾ ਭਾਣੇ ਦੇ ਉੱਤੇ ਛੱਡਣ ਦਾ ਸਾਹ ਹੋਣ ਨੂੰ ਨਾਉਣ ਨੂੰ ਫੈਸਲਾ ਲੈਂਦਾ ਹੋਇਆ ਵੀ ਨਹੀਂ ਲੈਂਦਾ ਕਰਮ ਕਰਤ ਹੋਏ ਨਹੀਂ ਕਰਮੀ ਫੇ ਕਰਮ ਕਰਤ ਹੋਏ ਨਹੀਂ ਕਰਮੀ ਜੀਵਨ ਚੱਲੇ ਨਾ ਚੱਲੇ ਦੀ ਚਾਹਤ ਨਹੀਂ ਹੈ ਇੱਛਾ ਨਹੀਂ ਉਹ ਪਰਮੈਸ਼ਰ ਦੀ ਇੱਛਾ ਜੀ ਬੰਦਲੇ ਆ ਨਾ ਚਲੇ ਕਭ ਇਹ ਉਹਦਾ ਉਹ ਨਹੀਂ ਲੈ ਰਹੇ ਉਹਦੀ ਇੱਛਾ ਤੇ ਫੇਰੇ ਨਿਹਾਰ ਨੂੰ ਕਹਿ ਸਕਦੇ ਆ ਅਸੀਂ ਇਹਨੂੰ ਵੀ ਕਹਿ ਸਕਦੇ ਆ ਇਹ ਤੋਂ ਸ਼ੁਰੂ ਹੋ ਜਾਂਦਾ ਅਸਲ ਮੇਰਾ ਹੱਥ ਅਸਰੀ ਛੱਡੇ ਤੋਂ ਬਾਅਦ ਹੀ ਹੈ ਜਾਣ ਲਿਆ ਉਹਦੀ ਗੱਲ ਆ ਉਹ ਨਿਹਾਰ ਉਹਨੂੰ ਕਿਹਾ ਜਾ ਸਕਦਾ ਪੱਕੀ ਨਹੀਂ ਕਿ ਸਾਨੂੰ ਕਿਹਾ ਜਾ ਸਕਦਾ ਮੇਰਾ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਲੇ ਨਭੇ ਜਿਹੜਾ ਨਿਰਵੈਰ ਨਿਰਾਹਾਰ ਪਰਲਵਰੋਧ ਵੀ ਹੋਣਾ ਚਾਹਿਆ ਜਨਾਂ ਦੇ ਸਰੀਰ ਚ ਪਰਲਵਰੋਧ ਵੀ ਹੋਣਾ ਚਾਹਿਆ ਜਨਾਂ ਦੇ ਸਰੀਰ ਚ ਨਿਰਾਹਾਰ ਨਿਰਵੈਰ ਸੁਖਦਾਈ ਨਿਰਾਹਾਰ ਨਿਰਾਹਾਰ ਸੁਖਦਾਈ ਹੈ ਉਸਕੀ ਕੀਮਤ ਕਿੰਨਾ ਨਾ ਪਾਈ ਜਿਹੜਾ ਨਿਰਵੈਰ ਉਹ ਕੌਣ ਹੈ ਸਤਪੁਰਖ ਹੈ ਨਾ ਨਰਾਹਾਰੇ ਨਿਰਬੈਰ ਹੈ ਸੁਖਦਾਈ ਹੈ ਇਹਦੀ ਵੀ ਕੀਮਤ ਨਹੀਂ ਜਿਨੇ ਪਾਈ ਹੁਣ ਇੱਕ ਯੂਨੀ ਤੇ ਅਸਲ ਤੇ ਸਤਪੁਰਖ ਦੀ ਕੀਮਤ ਨਹੀਂ ਜਿਨੇ ਪਾਈ ਸਤਪੁਰਖ ਦੀ ਆਡੀਓ ਵੱਡੀ ਕੀਮਤ ਬਣਾਤੀ ਜਿੱਡੀ ਸੱਚਖੰਡ ਵਾਲਿਆਂ ਦੀ ਹੈ ਬੱਦਦੀ ਹੈ ਤੇ ਸਾਰੇ ਇਹਦੇ ਵਰਗੇ ਨੇ ਇਹੋ ਜਿਹੇ ਆਹ ਜੇ ਮਰਵਾਹ ਨਾ ਚਾਹੁੰਦੇ ਹੈ ਔਰ ਸੁਖदाई ਹੈ ਉਹਦੀ ਹਰ ਗੱਲ ਸੁਖ ਦੇ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ ਬੁਰੇ ਦਾ ਵੀ ਭਲਾ ਕਰਦਾ ਉਹਦੀ ਸਾਰੇ ਬੁਰੇयां ਬੁਰੇ ਦਾ ਭਲਾ ਕਰਦਾ ਬੁਰੇ ਦਾ ਭਲਾ ਹੀ ਸਿੱਖਿਆ ਦੇਣੀ ਬੁਰੇ ਦਾ ਭਲਾ ਹੀ ਕੀਤਾ ਹੋੜ ਮਾਰਾ ਜੀ ਕੀਤਾ ਉਹ ਬਰਾ ਵੰਦੇ ਨੇ ਉਹਨਾਂ ਦੀ ਗਲਤੀ ਹੈ ਜੇ ਕੋਈ ਉਹਨਾਂ ਚਾਹੇ ਕਿ ਇਸ ਕਰਦੇ ਵੀ ਪਾਈ ਤੁਸੀਂ ਨਸ਼ਾ ਨਾ ਖਾਓ ਇਹ ਚੰਦੇ ਦੀ ਹੈ ਉਹਨੂੰ ਵੀ ਪੜਾ ਸਮਝਿਆ ਕੋਈ ਅਚਾਰਣਿਆ ਤਾਂ ਫਿਰ ਉਹਦਾ ਕਸੂਰ ਹੈ ਤਾਂ ਉਹਦੀ ਕਹਣਿਆਲਾ ਤੋਂ ਦੇ ਫੇਰ ਦੀ ਗੱਲ ਕਰੇ ਸੁਖਦਾਈ ਉਹ ਕਹਿ ਰਿਹਾ ਉਹਦੇ ਵਾਸਤੇ ਸੁਖਦਾਈ ਗੱਲ ਤਾਂ ਕਹਿ ਹੈ ਉਹਦੀ ਚਿੰਗਤ ਨਹੀਂ ਤਿੰਨੇ ਗੁਣ ਬਹੁਤ ਨੇ ਨਿਰਵੈਰ ਸੁਖਵਾਦ ਨਰਾਹ ਦਰਬਾਰ ਨਰਾਹ ਹੋ ਗਿਆ ਮਾਇਆ ਚ ਕੁਛ ਰੋੜ ਨਹੀਂ ਖਾਣਦੀ ਆਇਆ ਦੀ ਛਕਟ ਮੋਗੀ ਦਰਬਾਰ ਹੋ ਆ ਜੀ ਨੂੰ ਬੜੀ ਚੌਧਰ ਦੀ ਇੱਛਾ ਦੀ ਹੈ ਚੌਧਰ ਦੀ ਇੱਛਾ ਦੀ ਚੌਧਰ ਕਰਕੇ ਬੈਰ ਬੋਲਦਾ ਕੁਰਸੀ ਦਾ ਹੀ ਬੈਰ ਬੋਲਦਾ ਹੋਰ ਬੈਰ ਬੋਲਦਾ ਚੌਧਰ ਛੱਡੀ ਬਾਕੀ ਸੋਖਾ ਔਰ ਦੋਖ ਦੀ ਗੱਲ ਹੈ ਮੈਨੂੰ ਸੁਖ ਜਿਆਦਾ ਹੋਵੇ ਸੁਖ ਦਾ ਇਹ ਦੂਜੇ ਨੂੰ ਸੁਖ ਦੇਣ ਵਾਲਾ ਦੂਜੇ ਨੂੰ ਦੁੱਖ ਦੇਣ ਵਾਲਾ ਨਹੀਂ ਦੂਜੇ ਨੂੰ ਦੁੱਖ ਦਊ ਜਿਹੜਾ ਉਹਨੂੰ ਕਹਿੰਦੇ ਦੁੱਖ ਮਰਦੈ ਨੇ ਜਿਹੜਾ ਦੂਜੇ ਨੂੰ ਜੋ ਆਪਾਂ ਚੀਜ਼ ਦੇ ਦੇਣਾ ਜਦੋਂ ਆਪਾਂ ਕਿਸੇ ਨੂੰ ਰੋਟੀ ਖਾਣੇ ਦਾਨ ਕਰਦੇ ਹਾਂ ਜਿਹਨੇ ਦੁੱਖ ਦਾਨ ਕੀਤੇ ਨੇ ਦਾਨ ਕਰਨਾ ਜਿਹਨੇ ਦੁੱਖਦਾਨ ਕੀਤਾ ਤੇ ਦੁੱਖ ਦਿੱਤਾ ਲੋਕਾਂ ਨੂੰ ਦੁੱਖਦਾਨ ਕਰਦਾ ਹੋ ਉਹਦੇ ਗਾਹ ਦੁੱਖ ਫੜ ਗਏ ਗੁਰੂ ਦੁੱਖ ਮਿਲ ਗਏ ਜਿਹਨੇ ਸੁੱਖਦਾਨ ਕੀਤਾ ਉਹਨੂੰ ਸੁੱਖ ਮਿਲ ਗਏ ਉਹਦਾ ਸੁੱਖਾਂ 'ਚ ਵਾਧਾ ਹੋ ਗਿਆ ਲਾ ਗੱਲ ਹੈ ਦਾਨ ਦੁੱਖ ਵੀ ਦੇ ਸਕਦੇ ਆਂ ਅਸੀਂ ਦਾਨ 'ਚ ਸੁੱਖ ਵੀ ਦੇ ਸਕਦੇ ਹੁਣ ਹਰ ਦਾਨ ਕਰ ਲੋ ਜੇ ਆ ਬੋਲੋ ਜੇ ਦੁੱਖਾਂ ਦਾ ਦਾਨ ਕਰੋਗੇ ਦੁੱਖ ਭਰ ਜਾਣਗੇ ਗਾਂ ਦੁੱਖ ਬਦੂ ਨਾ ਤੁਹਾਡੇ ਕੋਲ ਮੁਹਗਰੀ ਤੁਹਾਡੇ ਕੋਲ ਦੁੱਖ ਦਾ ਇੱਕ ਤਾਂ ਹੀ ਵੱਜ ਲੈਂਦਾ ਹੈ ਇਸ ਕਰਕੇ ਦੁੱਖ ਜਟਨਾ ਸੀ ਸੁੱਖਾਂ ਦੇ ਜ਼ਰੂਰ ਕੀਤੇ ਨੇ ਦੁੱਖ ਕਿਥੋਂ ਹੋ ਗਏ ਅਸੀਂ ਅਣਜਾਣ ਪੜਨੇ ਚ ਦੁੱਖ ਬੀਜ ਰਹੇ ਹਾਂ ਉਨ ਜਾਣ ਬੀਜ ਵੀ ਦੁੱਖ ਰਹੇ ਆ ਗੱਲ ਸੁੱਖਾਂ ਦੀ ਕਰ ਰਹੇ ਆ ਕਿਕਰ ਵੀਜੇ ਜੱਟ 16 ਵੀਜ ਰਹਾ ਆ ਪਤਾ ਹੈ ਵੀ ਵੀਜੋਰ ਲਾ ਕੇ ਦਿਆਂ ਅੱਖਾਂ ਭਾਲਦਾ ਸੁੱਖ ਮਠੀਆਂ ਵੀਜ ਦਾ ਕੀ ਹੈ ਕਿਕਰ ਵੀਜੇ ਜੱਟ ਉਡਾਖਾਂ ਦੇ ਜਿਹੜੇ ਆਪਣੇ ਬੇਲ ਹੁੰਦੀ ਆ ਉਲੂਰਾਂ ਦੀ ਉਲੂਰਾਂ ਦੀ ਬੈਲੂ ਦਾਖਰ ਲੱਗਦੀ ਹੈ ਉਹਨੂੰ ਕੱਡੇ ਦਾ ਹੁੰਦੇ ਟਾਕਾਂ ਮਿੱਟੀ ਆਉਂਦੀਆਂ ਨੇ ਉਹਦੇ ਦਾ ਛਾਂਜ ਵੀ ਲੋਕ ਬਹਿ ਜਾਂਦੇ ਨੇ ਪਹਿਲਾਂ ਦੀ ਛਾਂ ਜਿੱਦੀ ਹੁੰਦੀ ਹੈ ਠੰਡੀ ਉੱਤੇ ਬੇਲਾਂ ਝਾੜੀ ਆਉਂਦੀਆਂ ਨੇ 6 6 ਫੁੱਟ ਉੱਚੀਆਂ ਕਰਕੇ ਥੱਲੇ ਗਰਮੀਆਂ ਦੇ ਮਹੀਨੇ ਤਾਂ ਉਹਦੇ ਸਮਝ ਲਓ ਬਹੁਤ ਠੰਡੀ ਜਗ੍ਹਾ ਹੁੰਦੀ ਹੈ ਸਾਫ਼ ਜਿਹਾ ਹੋਵੇ ਜਦੋਂ ਨਹੀਂ ਸੀ ਪੱਖੇ-ਪੁੱਖੇ ਏਸੀ ਵਗੈਰਾ ਉਹ ਤਾਂ ਏਸੀ ਵਰਗੇ ਜਗ੍ਹਾ ਸੀ ਹਾਂਜੀ ਅਨੰਕ ਭਗਤ ਬੰਦਨ ਨਿਤ ਕਰੇ ਚਰਨ ਕਾਮਨ ਹਿਰਦੇ ਸਿਮਰੇ ਇੱਕ ਭਗਤ ਨਹੀਂ ਹੈ ਅਨੇਕਾ ਭਗਤ ਨੇ ਆਇਆ ਭਗਤ ਬਥੇਰੇ ਨੇ ਅਨੰਕ ਭਗਤ ਜਿਹੜੇ 84 ਰੱਖ ਜੋ ਉਹਨਾਂ ਭਗਤ ਸਾਰੇ ਹੀ ਨੇ ਆਦਮੀ ਨੂੰ ਛੱਡ ਕੇ ਆਦਮੀਆਂ ਦੇ ਕੋਈ ਕੋਈ ਜਿਹੜੇ ਦਰਖਤ ਖੜੇ ਨੇ ਜਿੱਥੇ ਖੜਾਤੇ ਉੱਥੇ ਹੀ ਖੜੇ ਨੇ ਤੇ ਜਲਮਤ ਦੇਤਾ ਉਹ ਕਹਦੇ ਨਹੀਂ ਮੰਨਣਾ ਨੀ ਕਰਦੇ ਖੜੇ ਉਹ ਵਿਚਾਰੇ ਇੱਕ ਲੱਤ ਬਾਹਰ ਖੜੇ ਨੇ ساری ਜਿੰਦਗੀ ਉੱਥੇ ਖੜੇ ਰਹਿਣੇ ਨੇ ਤਿਕਰ ਰਹਿੰਦੇ ਤਿਕਰ ਨੇ ਤੇਰੇ ਜੀਵਨ ਦੇ ਜਿਹੜੇ ਉਹ ਤੇਰੀ ਡਿਊਟੀ ਲਈ ਹੈ ਜਾਂ ਜੀਵਾਂ ਨੂੰ ਭਾਈ ਫੜ ਲੈਣਾ ਤੇਰੀ ਡਿਊਟੀ ਹੈ ਨਾ ਫੜ ਕੇ ਫਲ ਪੈਦਾ ਕਰਾ ਜਿਹੜੀ ਜਨਤਾ ਆਉਵੇ ਖਾਊਗੀ ਜਾਨਵਰ ਵੀ ਨੇ ਭਗਤੀ ਉਹ ਕਰਦੇ ਨੇ ਹੋਰ ਕਰਦੇ ਹਨ ਕਿ ਭਗਤਾਂ ਦਾ ਆਪਣੀ ਆਪਣੀ ਪੌੜੀ ਸਾਰੇ ਚੜਦੇ ਨੇ ਭਗਤੀ ਕਰਕੇ ਇੱਕ ਪੌੜੀ ਚੜ੍ਹ ਗਏ ਬੰਦਗੀ ਕਰਕੇ ਬੰਦਗੀ ਕਰਕੇ ਬੰਦਨ ਵਿੱਚ ਜਨੈ ਹੋ ਤੇਰੇ ਹੁਕਮ ਜਨੈ ਪਾਹਣੇ ਜਨੈ ਬੰਦਾ ਝੋਜਰ ਹੈ ਵਿੱਚ ਬੰਦੀ ਉਹ ਬੰਦੀ ਬੰਦਨ ਦੇ ਵਿੱਚ ਨੈ ਜਿੱਥੇ ਤੱਕੜਾ ਤੇ ਤੇਰੇ ਆਰਡਰ ਜਨੈ ਖੜੇ ਹੋ ਹਕਮ ਜੀ ਜੁੜੇ ਹੋਏ ਨੇ ਅਨਕ ਪਗਤ 12 ਨਿਤ ਕਰਾਂ ਜਨ ਕਮਰ ਹਿਰਦੇ ਸਿਮਰੇਂ ਤੇਰਾ ਭਾਣਾ ਹਕਮ ਬੁਲਦਾ ਨਾ ਜਨ ਕਮਰ ਹਿਰਦੇ ਸਿਮਰੇਂ ਬਸ ਤੇਰੇ ਧਿਆਨ ਚ ਨਾ ਵੀ ਅਸੀਂ ਉਹਨਾਂ ਨੂੰ ਇੰਨਾ ਸਕੂਨ ਆ ਵੀ ਅਸੀਂ ਪਾਣੇ ਚ ਖੜਿਆ ਪਾਣੇ ਚ ਖੜਨ ਦਾ ਯੋਗਨ ਨੂੰ ਨਾ ਉਹਦੇ ਅੰਦਰ ਜੀਨ ਵਾਲੀ ਜੋ ਜ਼ਿੰਦਗੀ ਵਜੀਦ ਕਰ ਲੈਂਦੇ ਪਾਣੇ ਚੋਂ ਇਹ ਨਹੀਂ ਮਿਲਦੀ ਹੈ ਫੋਕ ਤੇ ਜੀਵਨ ਲੰਘਦਾ ਹ। ਤੇ ਕਈ ਤਾਂ ਇਹ ਜਿਹੜੇ ਦੂਰ ਕਵੀ ਨੇ ਛੋਟੇ ਇਹਨਾਂ ਨੇ ਵੀ ਲਿਖਿਆ। ਕਹਿੰਦੇ ਦਰਸ਼ਤ ਜਿਹੜਾ ਹੁੰਦਾ ਕੀ ਕਰਦਾ? ਇੱਥੇ ਤੇ ਪੱਥਰ ਮਾਰਿਆ ਉਸ ਤੇ ਫਲ ਦੇ ਤੋ। ਇਧਰੋਂ ਤਾਂ ਚੱਕ ਕੇ ਅਸੀਂ ਪੱਥਰ ਮਾਰਦੇ ਉਧਰੋਂ ਸਾਨੂੰ ਪੱਕਾ ਫਲ ਮਿਲਦਾ। ਤਾਂ ਕੀ ਕਰਦਾ? ਪੱਕਾ ਫਲ ਦੇਖ ਲਿਆ। ਚੱਕ ਕੇ ਪੱਥਰ ਮਾਰਿਆ। ਉਹ ਕਹਨ ਲਾ ਲਾ ਲਾ ਫੜ ਉਹ ਫੜ ਦਿੰਦਾ ਉਹ ਪੱਥਰ ਮਾਰਦਾ ਆਦਮੀ ਪੱਥਰ ਤੇ ਜੇ ਕੋ ਆਦਮੀ ਮਾਰਦਾ ਪੱਥਰ ਆਦਮੀ ਪੱਥਰ ਮਾਰਦਾ ਫੜ ਦੇ ਰਿਹਾ ਤੇ ਆਦਮੀ ਨੂੰ ਫਿਰ ਰੱਜਣਾ ਹੋਇਆ ਕਾਜ਼ਮੀ ਜਣਾ ਸਰਬੇਸਾਨ ਨੂੰ ਲੋੜੀਏ ਸਭ ਖਾਨੇ ਜਰਾ ਦੇ ਵਰਗਾ ਜੇ ਚਾਹੀਦਾ ਜੇ ਪੱਥਰ ਵੀ ਮਾਰੇ ਉਹਨੂੰ ਫੜ ਦੇ ਬੁਰੇ ਦਾ ਭਲਾ ਕਰ ਦੋਈ ਨਹੀਂ ਤਾਂ ਬੁਰੇ ਦਾ ਭਲਾ ਇਹ ਬੰਦਨ ਨਿਤ ਕਰਾਂ ਚਰਨ ਕਮਲ ਹਿਰਦੇ ਚੰਦੇ ਚਰਨ ਕਮਲ ਹਿਰਦੇ ਚੰਦੇ ਸਮਾਧ ਉਹ ਕਮਨ ਹਿਰਦੇ ਵਿੱਚ ਤਾਲਣ ਕਰਕੇ ਰੱਖਦੇ ਨੇ ਚੇਤਾ ਰੱਖਦੇ ਨੇ ਨਾ ਇਹਨਾਂ ਵਾਸਤੇ ਡਿਊਟੀ ਹੈ ਨਾ ਬੁਰੇ ਦਾ ਭਲਾ ਕਰਨਾ ਆਪਾਂ ਇਹ ਅਸਲ ਤੇ ਮੈਨੂੰ ਟੀ ਪੱਥਰ ਮਾਰਦਾ ਇਹ ਤਾਂ ਉਹ ਜਿਹੜਾ ਹੈ ਨਾ ਫਾੜ ਜਾਂਦਾ ਬਈ ਉਹ ਜੇ ਫਾੜ ਲਾਉਂਦਾ ਦੇਖਾ ਬਲ ਪੱਥਰ ਮਾਰਦਾ ਜਦੋਂ ਜਦ ਫੜਨੀ ਲੱਗਿਆ ਇਹ ਪੱਕਿਆ ਨਹੀਂ ਉਦੋਂ ਨਹੀਂ ਮਾਰਿਆ ਨੇ ਫਿਰ ਫੁੜਕੇ ਮਾਰਿਆ ਤਾਂ ਨੀ ਮਾਰਦਾ ਹਰ ਜਾਂਦਾ ਹਰ ਜਾਂਦਾ ਦੇ ਦੋ ਇਹਨੂੰ ਹਾਂ ਸਤਿ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨਾ ਹੈ ਬਲਿਹਾਰੀ ਸਤਿਗੁਰ ਆਪਣੇ ਆਪਣੇ ਸਤਿਗੁਰ ਤੇ ਸਤਿ ਬਲਿਹਾਰੀ ਜਾਂਦਾ ਓਹੋ ਜਿਹੜਾ ਸਤਿਗੁਰ ਦੇ ਵਾਲਾ ਹੈ ਜੇਦਾ ਵੀ ਸਤਗੁਰ ਹੈ ਸਤਗੁਰ ਦੀ ਪਛਾਣ ਜਿਹਨੂੰ ਸਤਗੁਰ ਦੀ ਪਛਾਣ है, ਬਲੇ कुर्बान हो ਜਾ ਸਕਦਾ नहीं ਦੀ ਜਸ ਸਤ ਬਲੇ ਹਰੀ ਸਤਗੁਰ ਆਪਣੇ ਜਿਹਨਾਂ ਨੂੰ ਸਤਗੁਰ ਦੀ ਪਛਾਣ ਨਹੀਂ ਸੀ ਵੇਦਾਵਾ ਲੈ ਕੇ ਆਇਆ ਜਿਹਨਾਂ ਨੂੰ ਪਛਾਣ ਸੀ ਉਹੀ ਨਾਲ ਰਹੇ ਬਲੇ ਹਰੀ ਹੋਈ ਰਹੇ ਹਾਂ ਜਿਹਨਾਂ ਨੂੰ ਪਛਾਣ ਜਿਹਨਾਂ ਨੂੰ ਪਛਾਣ ਨਹੀਂ ਸੀ ਦਸੂ ਦਸੂ ਮੈਂ ਡੁੱਲ ਗਿਆ ਸੀ ਪਛਾਣ ਥੋੜਿਆ ਨੂੰ ਹੁੰਦੀ ਹੈ ਪਛਾਣ ਵਾਲੇ ਗੁਰਸਤ ਗੁਰ ਕਰਕੇ ਸਿੱਖ ਰਹੇ ਨੇ ਬਾਕੀ ਦੂਏ ਛੱਡਦੇ ਰਹੇ ਨੇ ਸਾਰੇ ਕੱਚੇ ਭਾਈ ਹੁੰਦੀਆਂ ਉਹਨਾਂ ਦੇ ਇਕੱਲੇ ਲਵਾਣੇ ਦੀ ਗੱਲ ਆਉਂਦੀ ਹੈ ਹਾਂ ਲਵਾਣੇ ਨੂੰ ਦਾਨਕ ਜਿਸ ਪ੍ਰਸਾਦ ਐਸਾ ਪ੍ਰਭ ਜੱਪਣਾ ਦਾਨਕ ਜਿਸ ਪ੍ਰਸਾਦ ਐਸਾ ਪ੍ਰਭ ਜੱਪਣ ਐ ਜਿੱਦੀ ਕਿਰਪਾ ਨਾਲ ਐਸੇ ਪ੍ਰਭ ਤੇ ਲੜ ਫੜਿਆ ਹੈ ਜਿਹਨੇ ਐਸੇ ਪ੍ਰਭ ਨਾਲ ਲੜ ਫੜਾਤਾ ਜਿਹੜਾ ਘਾਹੇ ਘਾਹ ਘਾਹ ਜਹਾ ਰਸਤਾ ਰੁਕਦਾ ਹੀ ਨਹੀਂ ਜਾਈ ਜਾਂਦੇ ਅੱਗੇ ਵੱਲ ਕੇ ਕਿਤੇ ਰਕਾਬ ਦਉਦੀਓ ਨਹੀਂ ਉਹ ਜਿਹੜਾ ਸਤਿਗੁਰ ਹੈ ਉਹਦੇ ਤੇ ਕੁਰਬਾਨ ਕੱਢ ਸਤਿਵਲੇ ਹਾਰੀ ਸਤਿਗੁਰ ਆਪਣੇ ਨੂੰ ਆਪਣੇ ਨਾਨਕ ਜਿਸ ਪ੍ਰਸਾਦ ਪਾਵੇ ਜਨ ਕੋਏ ਅਮਰਤ ਪੀਵੇ ਅਮਰ ਹੋਏ ਬਲੇ ਹਾਰੀ ਲਫ ਜੜਾ ਹੁਣ ਨਾ ਫਲ ਜੇ ਬੁੱਧ ਦਾ ਫਲ ਹੁੰਦਾ ਜਿਹੜਾ ਬੁੱਧ ਕੋ ਆਪਣਾ ਗਿਆਨ ਸੀ ਨਾ ਬੁੱਧੀ ਕੋ ਉਹਨੇ ਹਾਰ ਮੰਨ ਲਈ ਸਤਗੁਰ ਦੇ ਸਾਹਮਣੇ ਤਾਂ ਬਲੇ ਹਾਰੀ ਹੁੰਦਾ ਸਰੈਂਡਰ ਹੋ ਜੀਏ ਜੇ ਸਤਗੁਰ ਦੇ ਸਾਹਮਣੇ ਉਹਨੂੰ ਬਲੇ ਹਾਰੀ ਕਰਦੇ ਬਾਲ ਜਿਹੜਾ ਅਸੀਂ ਬੁੱਧ ਦਾ ਬਾਲੋ ਨੇ ਹਾਰ ਮੰਨ ਲਈ बुजवल नहीं बोलता है जे हार बन गया तबले हरि है बलहारी जो बली थी बुद्ध अपने आप नु समझ ओ हार बन गई ओ तैयार जरूरत है सतगुरु अपने दे सामने सिखयाई ता लूं जे हार बनजू पाणा बदू बनू नु या ओ से क्या कुर्बानी गुरु बनो ਗੁਰਬਾਣ ਨੂੰ ਸਤਗੁਰ ਦੀ ਬਾਣੀ ਮੰਨੋ ਸੱਚੀ ਬਾਣੀ ਮੰਨੋ ਉਹ ਸਿੱਖਿਆ ਲਓ ਇਹ ਸਿੱਖਿਆ ਨਹੀਂ ਲੜੀ ਆਪਣੇ ਬੁੱਧੀ ਆ ਲੋਕਾਂ ਦੀ ਇਹਦੇ ਵਿੱਚ ਵੀ ਇਹਨਾਂ ਨੇ ਵੇਖ ਜੇ ਔਰਤਾਂ ਨੂੰ ਰੱਬ ਨਹੀਂ ਮੰਦੀ ਗੁਰਬਾਣੀ ਐਸੀ ਗੁਰਬਾਣੀ ਨੂੰ ਅਸੀਂ ਨਹੀਂ ਬੁੱਝਦੇ ਇੱਥੇ ਤਾਂ ਕਹਿਣ ਨੂੰ ਤਿਆਰ ਨੇ ਲੋਕ ਨਾ ਮੰਨੋ ਤੁਹਾਨੂੰ ਕਹਿਣਾ ਥੋੜੋ ਕਹਿਣਾ ਉਥੋਂ ਭਾਗਖੰਡ ਤੋਂ ਤੁਹਾਨੂੰ ਕਿਸਨ ਸਪਾਰਸ਼ ਭੇਜੀ ਆ ਵੀ ਤੁਸੀਂ ਜਰੂਰ ਮੰਨੋ ਜਿਹਨਾਂ ਬਾਬਾ ਦਾ ਜਣਾ ਰਹੇ ਰਹੋ ਜਿਹਨਾਂ ਦਾ 11 ਸਾਲ ਨਾਲ ਰਹਦੇ ਰਹੋ ਉਹਨਾਂ ਨੂੰ ਕੀ ਫਰਕ ਕਿਸੇ ਨੂੰ ਕੀ ਫਰਕ ਪੈਂਦਾ ਨਹੀਂ ਮੈਨੂੰ ਨਾ ਕੋਈ ਕਿਸੇ ਦਾ ਕੀ ਨੁਕਸਾਨ ਹੋਗਾ ਤੋਂ ਤੁਹਾਡੇ ਨਾਲ ਨਾ ਰਾਜਾ ਪਰਮੇਸ਼ਰ ਦਾ ਜਣਾ ਤੁਹਾਡਾ ਹੋ ਜੀ ਸਕਦਾ ਮਰਦ ਤੋਂ ਤੁਸੀਂ ਫੇਰ ਵੀ ਨਹੀਂ ਬਸ ਸਕਦੇ ਦੁੱਖ ਸੁੱਖ ਫੇਰ ਵੀ ਤੁਹਾਨੂੰ ਪਰਮੇਸ਼ਰ ਦੀ ਰਜ਼ਾ ਨਾਲ ਰਹਿਣੇ ਨੇ ਤੂੰ ਰਣਾ ਦਾ ਹੋਵੇ ਸੇ ਟੋਟਕ ਕਰਨਾ ਫਾਇਦਾ ਹੋਣਾ ਹੀ ਪੈਣਾ ਤੁਸੀਂ ਜੋ ਮਰਜ਼ੀ ਕਰਿਓ। ਹੇ ਸਤਿ ਬਿਨਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣਾ ਹੈ। ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪੜੈ।